ਉਸ ਸਤ ਕਹੇ ਜਿਹੜੇ ਤੁਹਾਨੂੰ ਆਸਰਾ ਨਾ ਪਾਰਾ ਬਾ ਨਾਮ ਕਰ ਰਚਨਾ ਰਚਨਾ ਦੀ ਗੱਲ ਆ ਸੰਤ ਸੂਝ ਪਹੜਾਂ ਦੀ ਗੱਲ ਚੇਤਨ ਰਚਨਾ ਇਕੱਠੇ ਜਿੱਥੇ ਉਹਦੀ ਗੱਲ ਜਿੱਥੇ ਰਚਨਾ ਹਰ ਹੈ ਰਚਨਾ ਉਹ ਹੈ ਰਚਨਾ ਉਹ ਹੈ ਬਾੜ ਨਹੀਂ ਚੰਦੇ ਨਹੀਂ ਆ ਸਕਦੇ ਆ ਜਾਣਗੇ ਉਦੋਂ ਕੁਝ ਕੁ ਆ ਜੂਗੇ ਬਾਕੀ ਸਾਰੇ ਆ ਜਾਣਗੇ ਯਾਰੇ ਖਣਜ ਯਾਰੇ ਦੇ ਵੀ ਜਾੜਾ ਨੇ ਆ ਜਾਣੀਗੇ ਕਿਹ ਜੇ ਨਹੀਂ ਕਿਹ ਜੇ ਕੋਟ ਆ ਜਾਣਗੇ ਇਹ ਉਹਦਾ ਸੋਲ ਲੈਂਦੇ ਨੇ ਆਪਣੇ ਇਹ ਸ਼ਲੋਕ ਦੇ ਵਿੱਚ ਅਸੀਂ ਜਿੱਥੇ ਚੇਤਨ ਹੈ ਰਚਨਾ ਵਿੱਚ ਕੋਈ ਗੱਲ ਰਚਨੋਂ ਕਿ ਕਿਤੇ ਜੇ ਤਨ ਕੋਈ ਜੀ ਫੋੜ ਫੜੋ ਉਸ ਤੋਂ ਇਸ ਦੀ ਸਲੋਕ ਸਲੋਕ ਨਹੀਂ ਹੈ ਜੇ ਪੜ ਲਿਆ ਪਾਣੀ ਪਾਸ ਉਰ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸਭੋਗੀ ਕਈ ਕੋਟ ਸਿੱਧ ਜਤੀ ਜੋਗੀ ਸਿੱਧ ਜਤੀ ਜੋਗੀ ਜਿਹੜੇ ਨੇ ਬੰਦੇ ਨੇ ਚੇਤਨ ਦੇ ਦੇਹ ਦਾ ਹਰੀ ਚੇਤਨ ਨੂੰ ਸੰਬੋਧਨ ਕਰ ਸਕਦੇ ਆ ਰਚਨਾ ਦੇ ਵਿੱਚ ਦੇਖੋ ਠੀਕ ਹੈ ਇੱਥੇ ਜਿਆਦਾ ਚੇਤਨ ਜਿੱਥੇ ਵਿਲੇ ਹੋਈ ਰਚਨਾ ਹੈ ਜਿੱਥੇ ਜਿਆਦਾ ਦੇਦ ਇਕੱਠੇ ਨੇ ਉਹ ਰਚਨਾ ਹੈ ਜਿੱਥੇ ਕੱਲਾ ਜੜਾ ਉਹ ਰਚਨਾ ਹੈ ਦੀ ਚੇਤਨ ਬਿਨਾ ਜੜ ਤੇ ਇਥੇ ਹੈ ਨਹੀਂ ਬਿਨਾ ਮਾਇਆ ਤੇ ਇਥੇ ਹੈ ਨਹੀਂ ਐਦੇ ਵਿੱਚ ਜੇ ਕੋਈ ਚੇਤਨ ਜੜ ਤੇ ਜਦੋਂ ਉਹ ਉਹਦੀ ਅਕਸਰ ਸਿਰ ਤੇ ਨ ਜਾਣੂ ਗੋਸਦੇ ਹੋ। ਕੂੜ ਉੱਗਦੇ ਹੈ। ਤਾਂ ਉਹਦੀ ਅਕਸਰ ਜਿੱਦਤੀ ਹੁੰਦੀ। ਕਈ ਕੋਟ ਸਿੱਧ ਜਤੀ ਯੋਗੀ ਕਈ ਕੋਟ ਰਾਜੇ ਰਸ ਭੋਗੀ। ਕਈ ਕੋਟ ਸਿੱਧ ਜਤੀ ਜੋਗੀ। ਕਈ ਕਰੋੜ ਹੈ ਸਿੱਧ ਜਤੀ ਜੋਗੀ। ਤੁਹਕੇ ਦੇਦੇ ਜਤੀ ਕਰਦੇ ਜੋਗੀ ਕਰਦੇ ਜੇ ਕਿ ਤੋ ਅਨੈਤਿਕ ਯਤਨ ਕਰ ਰਹੇ ਨੇ ਤੇ ਯਤਨ ਤੇ ਲੱਗੇ ਰਹੇ ਜਤੀ ਪਰਮਦੇ ਅੰਦਰ ਦੇ ਬਾਹਰ ਅੰਦਰ ਵਿੱਚ ਜਿਹੜੇ ਮਤਲਬ ਹੈ ਸੋਚ ਰਹੇ ਸੀ ਜਿਹੜੇ ਸੋਚ ਰਹੇ ਸੀ ਵਿਚਾਰ ਰਹੇ ਸੀ ਪਰਮਦੇ ਅੰਦਰ ਦੇ ਬਾਹਰ ਦੇ ਘੜੇ ਵਿੱਚ ਦੇ ਇਹ ਵੀ ਕਰੋੜਾਂ ਦੇ ਉਹ ਜੀਵ ਸਾਰੇ ਜਿਹੜੇ ਸ਼ਰੀਰ ਛੱਡ ਜਾਂਦੇ ਨੇ ਸੇ ਸੇ ਆ ਰਹੇ ਸਾਰੇ ਜੀ ਆ ਸਾਲ ਨੂੰ ਜੁੜੀ ਹੋਵੇ ਜਦੋਂ ਉਹ ਜੀ ਦੇ ਪੜਲੇ ਚ ਇਹ ਸਾਰੇ ਜਥੇ ਚ ਲੱਗੇ ਹੋਏ ਸੀ ਤੇ ਭਾਣੇ ਜੱਪਣੇ ਨੇ ਪੜਨੇ ਮੰਜ਼ਰ ਦੇ ਜਥਨ ਦੇ ਵਿੱਚ ਨਿਆਹ ਰਹੇ ਹੋੜੀ ਚੜਦੇ ਹੀ ਆ ਰਹੇ ਹੋ ਬਿਜੜ ਰੁਕਦੇ ਨਹੀਂ ਸਲਕੀ ਚ ਜਨ ਹੁੰਦੇ ਆਹ ਜਦ ਰੁਕਦੇ ਵੀ ਹੋੜੀ અને જે દે જતન એક દે જતી લફઝ આવતો લગા યતપ وچ لگયા હોયા હા તો યે થી ਜਿਹੜਾ ਯਤ મતલਬ ਯਤਨ કાર્ય ਹੈ ਜਦੋਂ ਕਰ ਰਹੇ ਹੈ ਜਿਹੜਾ ਲગયા ਹੈ ਯਤਨ ਦੇ ਵਿੱਚ ਲਗਾતાર મુડખ મુડખ જતન ਤੇ દે श्री जाते और तो मर्द दोनों हो गए ना ऐथे आके एक ऐथे आके ये गल बिगड़ दी बाकी लगे और तो मर्द भी गुनादा पैसे धो दे और दा औरत और मर्द विच बदल जाते ने गुरवान चस रही है ਅਗਲਾ ਜਨਮ ਮੌਲਦਾ ਵਰਜਾਣਾ ਆਇਆ ਅਗਲਾ ਜਨਮ ਵਰਜਾ ਬੈਣਾ ਹੈ ਦਸਤ ਨਾਰੀ ਤੇਜਪੁਰਸਾਇ ਇੱਕੁਰ ਖਤੇ ਜੋ ਨਾਰੀ 100 ਕੁ ਮੀਟਰ ਤੋਂ 100 ਮੀਟਰ ਇਸ ਮੂਰਤ ਬਣੇਗਾ ਕੋਈ ਦਫਰ ਹੈ ਜਿਹੜੇ ਯਤਨ ਚ ਲੱਗੇ ਹੋਏ ਸੀ ਉਹ ਕਈ ਕੋੜੇ ਕਰੋੜਾਂ ਕੋਲ ਕਿਤੇ ਦੁੱਖਾ ਦੀ ਗੱਲ ਨਹੀਂ ਹੈ ਇਹ ਜੀ ਨੂੰ ਦੇਵ ਨੂੰ ਕੋਤ ਥਲੇ ਨਹੀਂ ਜੂਝ ਜਾ ਸਕਦਾ ਉਥੋਂ ਵੀ ਨਾ ਜਤੀ ਜਤੀ ਤੇ ਲੱਗਿਆ ਹੋਇਆ ਕਿਹੜੀ ਇਹ ਤੇ ਚੱਲਣ ਕੀਦਾ ਦਾਣਾ ਕੇ ਚੱਲਣ ਦੇ ਸ਼ੁਰੂ ਕੀਤਾ ਹੋਇਆ ਕਈ ਕੋਟ ਸਿੱਧ ਜਤੀ ਕਈ ਕੋਟ ਰਾਜੇ ਰਸੋਗੀ ਕਈ ਕੋਟ ਸਿੱਧ ਜਤੀ ਯੋਗੀ ਕਈ ਕੋਟ ਸਿੱਧ ਸਿੱਧ ਪਰ ਸਿੱਧ ਸਮਯਾਹੀ ਜਿਰਨੂ ਸੱਤ ਹੁੰਦਾ ਦੋਪਰਾਰਥਾਂ ਹਾ ਉਹ ਤਾਂ ਬਦਲੀ ਨਹੀਂ ਸਿੱਧੇ ਪਾਈ ਆ ਦੋਪਰਾਰਥ ਹੋ ਗਏ ਉਹ ਤਾਂ ਬਦਲ ਗਈ ਅੱਗੇ ਵਾਲੇ ਦੋ ਤੇ ਹੀ ਬਲੇ ਅਰਾਧਨਾ ਦੇ ਦੋਤਾ ਆਪਣੇ ਤੇ ਬਸ ਦੀ ਗੱਲ ਦਸੀ ਦੋਪਰਾਰਥ ਦਾ ਇਹ ਆਪਣਾ ਜਤਨ ਸੀ ਨਹੀਂ ਕਈ ਕੋਟ ਦੇ ਆ ਗਏ 83 ਸਿੱਧ ਨੇ ਉਹਨਾਂ ਦੀ ਗੱਲੇ ਨਹੀਂ ਹੈਗੀ ਗੱਲੇ ਹੋਰ ਸਿੱਧਾਂ ਦੀ ਛੱਡੋ ਪਰੇ ਉਹਨਾਂ ਦਾ ਤਾਂ ਉਹ ਤਾਂ ਗੱਲੇ ਹੀ ਖਤਮ ਹੋ ਆ ਉਹ ਨੇ ਅਵਤਾਰ ਕਈ ਕੋਟ ਦੀ ਅਵਤਾਰ ਇੱਥੇ ਜੋ ਅਵਤਾਰ ਨੇ ਲੋੜੀਂਦੀ ਹੁੰਦੀ ਹੈ ਸਭ ਕੁਝ ਗਿਆ ਉਹ ਤਾਂ ਗੱਲੇ ਹੀ ਕੀਤੀਆਂ ਕਈ ਕੋਟ ਸਿੱਧ ਅਪਣ ਸਮਝਣ ਕਿ ਸਿੱਧ ਕੀ ਸਤਿਗੁਰੂ ਦੇ ਅਕਾ ਕਰਦਾ ਪੁੱਗਿਆ ਹੋਇਆ ਜੋਗੀ ਜੀਨੇ ਜੋਗਯੁਗਤ ਜਾਣ ਲਈ ਉਹ ਖਬਰਾਂ ਕੀਚ ਪੁੱਗੇ ਜੋਗੀ ਰੂਪ ਕੀਚ ਪੈਸਾ ਹੋ ਗੋ ਜੀਨੇ ਜੋਗਯੁਗਤ ਪਾ ਲਈ ਅੰਜਨ ਮਾਹੇ ਨਰੰਦ ਦੇ ਰਈਆ ਜੋਗਯੁਗਤ ਜਿਹੜਾ ਇੱਥੇ ਥੇ ਪਹੁੰਚ ਗਿਆ ਜੋਗੀ ਹੈ ਜੋਗੀ ਸੰਸਕਰਣ ਵਿੱਚ ਜੋਗੀ ਸੰਦ ਜੋਗੀ ਹੋਈ ਸਿੱਧਾ ਤੇ ਉਹ ਵਿੱਚ ਕੋਈ ਫਰਕ ਨਹੀਂ ਜੇ ਜੋਗੀ ਆ ਤਾਂ ਸਿੱਧਾ ਤੇ ਸਿੱਧਾ ਦਾ ਜੋਗੀ ਹੋਰ ਬੇਰੰਗੀ ਵੀ ਹੋ ਬੇਰੰਗੀ ਜੋਗੀ ਇਕੱਠਾ ਆਇਆ ਹੋਇਆ ਲਾਭ ਲਈ ਲਾਭੀ ਕੋਲ ਸਟੈਂਡਰਡ ਦੇ ਨੇ ਜੋਗੀ ਵੀ ਬੇਰੰਗੀ ਵੀ ਸਿੱਧ ਵੀ ਇਹਨਾਂ ਨੇ ਸਾਡਾ ਜੀ ਬਣਾ ਲੀਆ ਜਿਹੜਾ ਹੈਗਾ ਸ਼ਬਦ ਆਪਣੇ ਆਪ ਉੱਚਾ ਪਰ ਇਹਨਾਂ ਨੇ ਜਿਹਦਾ ਜ਼ੈਦਾ ਵੱਡਾ ਬਣਾਤਾ ਖਾਲਸਾ ਖਾਲਸਾ ਦਾ ਜ਼ੈਦਾ ਕੌਣ ਦਾ ਪਰਮੇਸ਼ਰ ਦਾ ਜ਼ੈਦਾ ਹੋ ਗਈ ਇਹ ਸਮਝ ਦੀਆਂ ਗੱਲਾਂ ਨੇ ਕਿਉਂਕਿ ਉਹ ਖਾਲਸਾ ਉਹ ਖਾਲਸਾ ਤਾਂ ਹੈ ਨਹੀਂ ਜਿਹੜਾ ਇੱਥੇ ਕਿਹਾ ਹੋਇਆ ਖਾਲਸਾ ਉਹ ਖਾਲਸਾ ਉਹ ਜਿਹੜਾ ਇੱਥੇ ਬਣਿਆ ਹੋਇਆ ਗੁਰਬਾਣੀ 'ਚ ਫਿਰ ਜ਼ੈਦਾ ਕੀ ਹੋ ਸਕਦਾ ਹੈ ਜਿੰਨੇ ਮੁੰਡੇ ਨੇ ਜੋਗ ਜੁਗਤ ਹਾਂ ਇਹਨਾਂ ਜੋਗ ਉਜਗਤ ਜਾਣ ਲਈ ਜੋ ਉਹ ਨਹੀਂ ਮਨਜੇ ਤਰੀਕਾ ਜਾਣ ਲਈ ਜਿਹਦੇ ਇਸ ਤਰ੍ਹਾਂ ਜਿਹੜਾ ਕੰਮ ਤਰ੍ਹਾਂ ਭਾਣੀ ਚੱਲਦਾ ਭਾਣੇ ਦੇ ਚੱਲਣਾ ਕੋਈ ਕੋਣਾ ਮਨਜੇ ਤਰੀਕਾ ਹੋਣ ਨਹੀਂ ਹੈ ਕੋਣ ਹੈ ਤੇਰੀ ਗੱਲ ਹੈਗੀ ਮਨਜੇ ਤਾਲੀਏ ਇੱਕ ਤਾਂ ਦੀ ਗੱਲ ਜਿਹਦਾ ਮਨ ਮਾਇਆ ਜੋ ਪਟਿਆ ਗਿਆ ਉਬਰ ਜੇ ਤੇ ਕਰ ਗਿਆ ਹੋ ਗਿਆ ਮਾਇਆ ਜੋ ਪਟ ਗਏ ਤਾਂ ਲਾਤਾ ਉਹ ਜਿਹੜੀ ਕਵੀ ਸੀ ਨਾ ਇਹਦੇ ਅੰਦਰ ਕਵੀ ਕੋਈ ਮਾਇਆ ਦੀ ਉਹਦੇ ਬਾਅਦ ਇਹ ਫਿਰ ਸੁਤੋਹੜੀ ਵਿਵਸਥਾ ਤਰਾਪੀ ਤੋ ਕੋ ਸੰਤੋਖ ਹੈ ਜੀ ਨਾ ਬੇਸੰਤੋਖ ਹੈ ਜੋ ਇਹਦਾ ਮਾਇਆ ਦੀ ਭੁੱਖ ਹੈ ਜੀ ਨਾ ਇਧਰ ਉਹ ਵੀ ਇਹੋ ਜਾਨ ਦੀ ਜਰੂਰਤ ਅਸੇ ਪੂਰੀ ਧਿਆਨ ਉਹ ਪੱਟਕੇ ਪੂਰਾ ਹੀ ਧਿਆਨ ਲਾਦਾ ਹਾਂ ਨਾਂ ਬਿਚ ਜਿਹੜਾ ਕੰਮ ਕਰਨਾ ਉਹਦੇ ਵਿੱਚੋ ਗਿਆਨ ਲੈਣਾ ਧਿਆਨ ਪੂਰਾ ਕਰਨ ਵਿੱਚ ਆ ਗਿਆਨ ਹੈ ਪੂਰਾ ਕਰਨੀ ਕੀ ਕਰਦੇ ਇਹੀ ਕੰਮ ਆ ਹੁਣ ਕੋਈ ਕੰਮ ਨਹੀਂ ਜੇ ਸਭ ਵਿੱਚ ਪੂਰਾ ਧਿਆਨ ਲਾਦਾ ਪੂਰੀ ਗੱਲ ਸਮਝ ਗਿਆ ਜੇ ਤਾਂ ਫਿਰ ਆਰਾਮ ਨਾਲ ਤੇ ਤਿਆਰ चार ਬੁੱਝ ਜਾਣਗੇ ਬੇ ਆਦਰ ਨਾਲ ਨਹੀਂ ਕਰਦਾ ਤਾਂ ਦੋ ਪਦਾਰਥ ਸਹੀ ਨੇ ਉਹ ਰੱਦ ਨਾ ਕੀ ਹੈ ਮੈਨੂੰ ਭੁੱਲਣ ਦੀ ਲੋੜਾ ਹੋਣਾ ਨਹੀਂ ਹਾਂਜੀ ਆਦਰ ਨਾਲ ਤਾਂ ਸ਼ੁਰੂ ਉੱਧਿਆ ਜਾਂ ਫਿਰ ਵਕਤ ਜਿਨ ਸਾਰੀ ਸੱਤ ਪੂਰੀ ਹੋ ਜਾਂਦਾ ਤਾਂ ਮਨ ਛੱਡਦਾ ਤਨ ਬੋਲ ਤਾਂ ਸਭ ਲੋਕ ਨੂੰ ਹਕੂਬ ਦੇਤਾ ਹੀ ਉਹ ਸਾਥ ਸਾਥ ਸਭ ਲੋਕ गोविंद ਉਹ ਫਿਰ ਉਹ ਫਿਰ ਅਵਸਥਾ ਦੇ ਵਿੱਚ ਆ ਕੇ ਸੁਣ ਜੋ ਉਹ ਕਿੱਦਿਆ ਨਾ ਨਹੀਂ ਉਹਨਾਂ ਫਿਰ ਜਦ ਕੀ ਕੱਚ ਹੁੰਦਾ ਉਹਨਾਂ ਮਨ ਵਿੱਚ ਤੇ ਗਾਹੀ ਜਿਸ ਤਰ੍ਹਾਂ ਉਹ ਸੁਧੀ ਰਹਦੀ ਹੈ ਜਿਸ ਤਰ੍ਹਾਂ ਉਹ ਸੁਧੀ ਰਹਦੀ ਕਈ ਕੋੜ ਰਾਜੇ ਰਸਤ ਵੀਈ ਕੋਈ ਕੋੜ ਰਾਜੇ ਦੀ ਉਹ ਰਸਾਂ ਦੇ ਉਹ ਭੋਗੀ ਨੇ ਉਹ ਭੋਗੀ ਦੇ ਰਾਜ ਰਾਸ ਕੋਹੀ ਰਾਸ ਆਹ ਜੋਗੀ ਨੇ ਸੱਚ ਸੱਚ ਜੀ ਨੇ ਉਹ ਯੋਗ ਬਾਤ ਕਰ ਰਹੇ ਸੀ ਉਪਕੀ ਕਰ ਰਹੇ ਨੇ ਇਹ ਪਕੀ ਝੋਲੀ ਕਰ ਰਿਹਾ ਰਾਜਾ ਰਾਜਾ ਤਾਂ ਪਕਦੀ ਦੀ ਕਰ ਰਿਹਾ ਰਾਜਾ ਸੇਵਾ ਕਰਤਾ ਕਹਿ ਰਿਹਾ ਸੇਵਾ ਦਾ ਕਹਿ ਸਕਦਾ ਮੈਂ ਸੇਵਾ ਕਰ ਰਿਹਾ ਜਨਤਾ ਦੀ ਇਹ ਗੱਲ ਸੇਵਾ ਕਰਦੇ ਨੇ ਉਹ ਕੀ ਜੇ ਜਨਤਾ ਦੇ ਸੇਵਾ ਕੰਨੀ ਨਹੀਂ ਨਹੀਂ ਚਾਹਦਾ ਤੇ ਬਸ ਤਾਂ ਨਹੀਂ ਹੈ ਉਹ ਸੇਵਾ ਕਰਦੇ ਨੇ ਜਾਂ ਨਹੀਂ ਕਰਦੇ ਬੋਲਦਾਰੀ ਨਾ ਕਰਦੇ ਨੇ ਬੇਇਮਾਨੀ ਉਹ ਰੱਖਦੇ ਇਸ ਸੇਵਾ ਹੈ ਜੇ کر دی ہو گئی جے تاں کر دی ہوے تاں ایਹੀ সেবা سبلو جاندی ہے سਤグル ਕੀ সেবা سبلو جے کو کرے جو سوال یہ اے گل نا ایتھے بھی سمجھتا ہو سکدیا اے ناں تو بھی بے ذات جان لینا ਗਿਆਨ تے بنا راج نہیں ہوندا انصاف نہیں ہوندا سانو بھی بدل انصاف کیا او تریا چرتا دے وچ مت بار دیندے راجے ਰਾਜੇ ਦੀ ਮਤਮਰੀ ਕੋਈ ਹੋਤੇ ਵੀ ਜੇ ਲੋਮਿਕ ਗਾਰੇ ਹਾਂ 11 ਵਾਰ ਬੁਨਾਰ ਆਜਿਹੀ ਹੁੰਦਾ ਹੈ ਅਫਸਰ ਬਤਮਾ ਹਜ਼ਰ ਦੇ ਅਫਸਰ ਰਾਜੇ ਦੀ ਗੱਲ ਦੋ ਸਾਰੇ ਬੇ ਕਬੂਨ ਗਰੀ ਹਾਂ ਹਾਂ ਗੱਤ ਅਫਸਰਾਂ ਨੇ ਆਪਣੇ ਮਤਲਬ ਸ਼ੰਕਾ ਹਰੇ ਤੇ ਸ਼ੰਕਾ ਖੜੀ ਕੀਤੀ ਫਿਰ ਸ਼ੰਕਾ ਦਾ ਬੈਨਫਿਟ ਦੋ ਬੁੱਝੂ ਜੇ ਸ਼ੰਕਾ ਦਾ ਮੈਂ ਨਹੀਂ ਬੁਲਜਮ ਨੂੰ ਤੇ ਫਿਰ ਤਾਂ ਇਲਾਜ ਹੋਵੇਗਾ ਬੁਲਜਮਾਂ ਨੇ ਤਾਂ ਕਾਨੂੰਨ ਬਣਾਏ ਨੇ ਕਾਨੂੰਨ ਬਣਾਉਣੇ ਵਾਲੇ ਖੁਦ ਬੁਲਜਮ ਦੇਣਾ ਸਾਡੇ ਜਿੱਦਣੇ ਨਾ ਕਾਨੂੰਨ ਬਣਾਉਣਗੇ ਉਧਰ ਬੁਲਜਮੜ ਤੇ ਆਉਣਗੇ ਗੁਰਬਾਣੀ ਦੇ ਵਿੱਚ ਬੁਲਜਮ ਇਸ ਨੂੰ ਜਿਹੜਾ ਸਭ ਦਾ ਸਾਰੇ ਦਿੱਤੇ ਆਏ ਹੋਏ ਕਹਿੰਦਾ ਤਾਂ ਭਜਦੇ ਤੁਸੀਂ ਸਾਡੀ ਮੱਥਾ ਹੀ ਦੇ ਗਦਾ ਨਾ ਭਜਦੇ ਉਹ ਹੋ ਬੋਧੋ ਲੈਣ ਕਈ ਕੋੜ ਰਾਜੇ ਰਸ ਕਈ ਕੋੜ ਰਾਜੇ ਰਸ ਕੋ ਗਏ ਦੇ ਸਾਹ ਦਾ ਸੱਜਣ ਰਾਜੇ ਰਾਸ ਕੋ ਗੀਤਾ ਦਰਗਾਹ ਦੇ ਰਾਜਾ ਨੂੰ ਰਸ ਕੋ ਵੀ ਬਦਿਆ ਹੋਏ ਦਰਗਾਹ ਦੇ ਦਰਗਾਹ ਦਾ ਫਤਵਾ ਹੈ ਵੀ ਜਿਹੜੇ ਰਾਜੇ ਨੇ ਰਸ ਕੋ ਹੁੰਦੇ ਸੀ ਖਾਂ ਕੋਟਰ ਨੂੰ ਗੋ ਰਾਜਾ ਜੋ ਨਹੀਂ ਸਕਦਾ ਕੋਟਰ ਨੂੰ ਕੋਈ ਨਾ ਹਾਰਾਂ ਉਹ ਰਾਜਾਂ ਚੋਂ ਵੀ ਹੋ ਸਕਦਾ ਉਹ ਦੂਜਿਆਂ ਚੋਂ ਵੀ ਹੋ ਸਕਦਾ ਜਨਤਾ ਚੋਂ ਵੀ ਹੋ ਸਕਦਾ ਪਰ ਰਾਜੇ ਦਾ ਕਰੋੜ ਜਾਂ ਇਕੱਠਾ ਕਰੇਗਾ ਫਿਰ ਉਸਨੇ ਜਿਆਦਾ ਹੋ ਜਾਣਗੇ ਇਸ ਕਰਕੇ ਰਾਜਿਆਂ ਚੋਂ ਕਦੇ ਵੀ ਕੋਈ ਹੋਇਆ ਭੰਤ ਰਾਜਾਂ ਚੋਂ ਜੇ ਹੋਇਆ ਭਾਗ ਤੋਂ ਬਹੁਤ ਵਿਚਾਰਾ ਉਹ ਰਾਜਾ ਵੀ ਹੈ ਜਿਹਾ ਇਸੀ 2-4 ਫਟੜਾ ਦਾ ਮਾਰਕੀਟ ਸਭ ਯਾਨੀ ਉਹ ਰਾਜਾ ਦੀਸੀ ਉਹ ਹੈ ਜਾਨ ਉਹ ਹੈ ਰਾਜਾ ਦੀਸੀ ਜਿਆ ਰਾਜਾ ਕੋਟ ਪੰਖੀ ਸਰਪ ਉਪਾਇਏ ਕਈ ਕੋਟ ਕਈ ਕੋਟ ਪਾਸਰ ਬਿਰਕ ਮੱਜਾ ਸਰਪ ਧੀਰ ਜਿਨ੍ਹਾਂ ਦਾ ਮਾਨ ਸਮਾਧੀ ਚ ਉਡਾਰੀਆਂ ਵਾਰਦਾ ਪੰਖੀ ਤੋਂ ਪੰਖੀ ਪਿਆ ਉਹ ਜੋ ਡਰਦਾ ਨਹੀਂ ਜਾਏ ਫਿਰ ਇਹ ਨਹੀਂ ਆਥੋਣੇ ਉੱਚੇ ਹੋੜਦੇ ਹੱਥ ਧੋਕੇ ਰਚਨਾ ਬਰਾਬਰ ਨਹੀਂ ਹੈ ਪੰਛੀ ਦਾ ਜਦੋਂ ਆਪਾਂ ਹੰਦੇ ਪੰਛੀ ਦੀ ਗੱਲ ਨਹੀਂ ਹੈ ਬਾਲੇ ਪੰਛੀ ਦੀ ਬਾਲੇ ਪੰਛੀ ਦੀ ਚਲੋ ਠੀਕ ਹੈ ਤਾਂ ਹੀ ਤਾਂ ਪੰਛੀ ਮਿਸਾਲ ਦਈਏ ਪੰਛੀ ਪਾਏ ਹੋਏ ਪਰ ਆਦਮੀ ਦਾ ਪੰਛੀ ਤੋਂ ਮਨੋਂ ਹਾਂ ਪ੍ਰੇਮਾ ਮੀਨੋ ਇਹ ਮਨ ਨਹੀਂ ਦਿਉਂਦੇ ਮਨ ਨਹੀਂ ਸਿਲਾਉਂਦੇ ਲੋਗ ਜਿਹੜਾ ਮਨਵੜਾ ਰੀਆਂ ਮਾਰਦਾ ਹੈ ਚਾਹੇ ਕਵੀ ਦਾ ਮਨ ਹੋ ਜਿਹੜਾ ਮਨ ਦੇ ਲੈਵਲ ਤੇ ਰੀਆਂ ਮਾਰਦਾ ਹੈ ਚਾਹੇ ਉਹ ਸੱਜਦਾਨ ਉਹ ਪੰਛੀ ਹੈ ਸਿੱਤਾਲੂ ਪੰਛੀਆਂ ਦਾ ਇਹ ਤਾਂ ਹੀ ਕਹਿੰਦਾ ਸੀ ਆਕਾਸ਼ ਚੁੱਟ ਗਿਆ ਉਹ ਆਕਾਸ਼ਰੀਰ ਕਰਕੇ ਛੁੱਟੇ ਆਉੜੇ ਹੋਏ ਤੇ ਅੰਕੀ ਇਹ ਜੋਗੀ ਭਾਂਜੀ ਉਹਨੇ ਦਾ ਵਾਵਾ ਜੇ ਉਹ ਮਾਰਦੇ ਨੇ ਉਹ ਉਹ ਜਿਹੜੇ ਸਮਾਧੀ ਲਾਉਂਦੇ ਨੇ ਨਾ ਉਹ ਕਲਪਨਯੋਈ ਵਾਵਾ ਜੇ ਉੱਠਦੇ ਨੇ ਕਾਸ਼ ਕਿ ਹੈ ਉਹ ਕੁਝ ਨਹੀਂ ਹੋ ਜਾ ਉਹ ਢਿੜਾ ਨਾ ਅੜਾ ਲਾਉਂਦੇ ਨੇ ਉਹ ਉੱਥੇ ਬੈਠੇ ਇਹ ਆਵੇ ਸ਼ਰੀਰ ਦੇ ਵਿੱਚ ਆਉਂਦੇ ਨੇ ਫਿਰ ਲੱਭ ਲੈਂਦੇ ਨੇ ਕੁਝ ਸ਼ਰੀਰ ਤੇ ਤਾਂ ਕੋਈ ਲੱਭ ਲਿਆ ਨਾ ਤੇ ਅੰਦੇ ਕੇ ਉਹ ਉੱਤੋਂ ਨਹੀਂ ਕੋਈ ਲੱਭਿਆ ਉੱਤਰਾਵਰ ਕੱਪੜੀ ਮਾਰੀਆਂ ਬਹੁਤ ਦੋ ਸਿੱਪੜੇ ਧਤੀ ਖੜੀ ਐ ਇਹ ਜੋਗੀਆਂ ਨੇ ਸਿਤਾ ਮਹਾਰਾ ਜੱਡੀ ਕਰਕੇ ਖੜੀਆਂ ਨੇ ਜੋਗੀ ਸਰਪ ਦੇ ਉਹਨਾਂ ਦੇ ਚੇਲੇ ਇਹ ਗੱਲ ਚ ਪਾਇਆ ਹੋਇਆ ਸਿਰਜੀ ਦੇ ਸਤਜਾ ਸਿੱਜਣਨ ਹੈ ਜਿਨ੍ਹਾਂ ਚ ਜੋਗੀ ਵੀ ਹੋ ਸਕਦੇ ਨੇ ਸਿੱਧ ਜੱਤੀ ਜੋਗੀ ਤਾਂ ਹੋ ਗਏ ਜਿਹੜੇ ਪੋਜ਼ਿਟਿਵ ਰਹੇ ਜਿਹੜੇ ਨੈਗੇਟਿਵ ਨੇ ਸਿੱਧ ਜੱਤੀ ਜੋਗੀਆਂ ਦੇ ਵਿੱਚ ਉਹ ਪੰਖੀ ਛੱਡ ਫੜਦੇ ਜਿਵੇਂ ਸਿੱਖਾਂ ਦੀ ਨਕਲੀ ਸਿੱਖ ਖਾਲਸੇ ਦੀ ਨਕਲੀ ਖਾਲਸਾ ਅਸਾਂ ਤਾਂ ਜਿ ਨਕਲੀ ਸੰਤ ਸਾਧਾਂ ਦੇ ਨਕਲੀ ਸਾਧ ਜਿਹੜੇ ਨਕਲੀ ਸਾਧ ਦੇ ਜੋਗੀ ਦੇ ਉਹ ਪੰਖੀ ਅੜ ਸਕਦੇ ਮਨ ਉਡਾ ਲੀਆ ਮਾਦਾ ਬੁਰ ਪੱਗੀ ਗਿਆ ਉਰ ਉਰਦਾ ਦੇ ਜਾ ਸਰਬ ਜਦ ਨੇ ਜਦ ਡੰਗ ਮਾਰਦੇ ਨੇ ਜਿਵੇਂ ਉਹ ਇਆਮ ਲੱਗਦਾ ਨਾ ਉਹ ਹਰਤਾ ਦੂਰ ਦੂਰ ਮੈਨ ਦੂਰ ਮਾਰਦਾ ਉਹ ਜਾਨਵਰਤਾ ਅਸੂਪ ਅਸੂ ਦੋਸ ਡੰਗ ਮਾਰਿਆ ਇਹ ਅਸਲੀਆ ਸੱਪ ਸੀ ਜਿਹੜੇ ਗੱਲ ਸੱਚੀ ਹੈ ਡੰਗੋਂ ਨਹੀਂ ਮਾਰਿਆ ਫਿਰ ਚੇਲੇ ਸੱਪ ਨੇ ਆ ਉਹ ਉਹ ਡਾਰੀਆਂ ਮਾਰਨ ਵਾਲਾ ਸੀ ਤਾਂ ਇਹ ਕਹਿੰਦੇ ਸਮਾਦੀ ਜਾ ਹਾਂ ਸਮਾਦੀ ਡਾਰੀਆਂ ਮਾਰਦੇ ਨੇ ਹੋਰ ਕੀ ਕਰਦੇ ਨੇ ਉਹ ਸਮਾਦੀਆਂ ਵਾਲਾ ਤਾਂ ਡਾਰੀ ਮਾਰ ਗਿਆ ਆਕਾਸ਼ 'ਚ ਡਾਰੀ ਰੌਣਕਾਂ ਦਾ ਸੀ ਜਿਹੜਾ ਉਹ ਸਰ ਜਿਹੜੇ ਦੂਏ ਦੇ ਸੱਪ ਨੇ ਇਹੋ ਜਿਹੇ ਵੀ 2 ਕਰੋੜ ਰੁਪਏ ਦਾ ਕੀਤਾ ਹੈ ਨਕਸ਼ਾ ਜੋ ਦੇਖੋ ਉਹ ਦਿਖਾਉਣਾ ਹੈ ਕਿ ਦੂਏ ਸੱਪਾਂ ਦਾ ਕੀ ਮਤਲਬ ਹੈ ਭਾਈ ਭੰਗੀ ਅਰਸਰ ਦਾ ਕੀ ਮਤਲਬ ਸੀ ਇੱਥੇ ਗੱਲ ਕੀ ਆ ਸਾਨੂੰ ਗਿਆਨ ਕੀ ਦਿੰਦੇ ਨੇ ਉਹ ਤਾਂ ਸਾਨੂੰ ਪਤਾ ਹੀ ਹੈ ਵੀ ਉਹ ਪਾਏ ਹੋਏ ਨੇ ਇਹ ਦੇਖ ਤੇ ਹੋਈ ਗਾਲੀ ਕੀ ਹੈ ਤੇਹਰ ਵਾਲੀ ਗੱਲ ਕੀ ਹੈ ਬੁੱਝਣ ਵਾਲੀ ਗੱਲ ਕੀ ਹੈ ਬੁੱਝਣ ਵਾਲੀ ਗੱਲ ਭੰਗੀ ਅਰਸਰ ਸਰਪ ਭੰਖੀਆਂ ਨੂੰ ਬਿਆਰ ਦੇਖਾ ਜਾਂਦਾ ਹੈ ਭੰਖੀਆਂ ਨੇ ਬਿਆਰ ਦੇਖਾ ਜਾਂਦਾ ਹੈ ਰੱਬ ਨਾਲ ਜੁੜ ਕੇ ਆਈ ਕੋ ਕਰਦੇ ਹਾਂ ਭੰਖੀਆਂ ਦਾ ਸਰਪਾਂ ਦਾ ਬੜਾ ਰਿਸ਼ਤਾ ਨੇੜੇ ਦਾ ਰਹਿੰਦਾ ਹੀ ਹੈ ਜਿਹੜੇ ਸਪੋਰਟਰ ਜਿਹੜੇ ਆਉਂਦੇ ਨੇ ਮੈਂ ਦੇਖੇ ਸਮਝਦੇ ਨਹੀਂ ਇਸ ਨੇ ਜੇ ਮਾਇਆ ਦੇ ਨੇ ਗੋਲੀਆਂ ਚਾਦ ਦੇ ਨਾ ਆਦੇ ਸੀ ਹੋਰ ਜੀ ਕਈ ਕੋਟ ਪਾਥਰ ਵਿਰਖ ਨੇ ਭਜਾਏ ਕਈ ਕੋਟ ਪਾਥਰ ਵਿਰਖ ਉਪਜਾਏ ਦੀ ਜੁਭਾਏ ਭਜਾਏ ਹੁੰਦਾ ਖਤਮ ਕਰਨਾ ਹੋਵੇ ਉਪਜਾਉਣਾ ਉੱਤੇ ਨੂੰ ਕਰਨਾ ਤੇ ਥੱਲੇ ਨੂੰ ਕਰਨਾ ਨਰਕ ਜਿੱਥੋਂ ਤਸਾ ਉਧਣਾ ਨਰਚ ਜਰੂਰ ਤਸੋ ਦੇਣਾ ਪ੍ਰਹਾਰ ਕਰਕੇ ਕਾਰ ਤੇ ਪ੍ਰਹਾਰ ਕਰਕੇ ਥੱਲੇ ਨੂੰ ਤਸੋ ਦੇਣਾ ਨਿਪਟ ਕੇ ਉੱਤੇ ਚੱਕ ਦੇਣਾ ਉਹ ਕੁਝ ਸਮਾਏ ਸੁਬ੍ਰੇਤ جے آپ نہ جے اپنی مرضی دور پھر سمجھاندا ہے کہ آپ مرے ਆਪ ਮਾਰੇ مارے اپنی اگلوں آپ بدلے خود بدلے پھر سمجھاتا ہے پر جے کوئی مارے جے حقکار مارے جے پھر ਉਹ ਤਾਂ ਫਿਰ ਆਪੇ ਮਰਿਆ ਇਹ ਗੱਲ ਤੇ ਪ੍ਰਹਾਰ ਦਮ ਕਿਸੇ ਨੇ ਕੀਤਾ ਕਿਸੇ ਨੇ ਕੀਤਾ ਸਰ ਪ੍ਰਹਾਰ ਉਹ ਕਿਵੇਂ ਹੁਣ ਆਦਮੀ ਜਿਉਂ ਤੋਂ ਥਲੇ ਦੇ ਜੂਨਾ ਬਣ ਗਿਆ ਉਹਨੇ ਬਜਾਇਆ ਬਜਾਇਆ ਉਸ ਤੋਂ ਧਰਨ ਚ ਲੱਗਿਆ ਇਹ ਦੌਣ ਭਾਲ ਨੂੰ ਜਾਂਦਾ ਪਰ ਨਿਭਜ ਗਿਆ ਉਹ ਨਿਭਜ ਗਿਆ ਜੇ ਗਿਆਨ ਵਧਦਾ ਉੱਪਰ ਗਿਆ ਜੇ ਗਿਆਨ ਦਾ ਲੈਵਲ ਵਧਦਾ ਉੱਪਰ ਗਿਆ ਜੇ ਗਿਆਨ ਦਾ ਲੈਵਲ ਘਟਦਾ ਜੇ ਪਰਮ ਦਾ ਲੈਵਲ ਵਧਦਾ ਗਿਆਨ ਦਾ ਲੈਵਲ ਘਟਦਾ ਸੇਧ ਦਿੱਤੀ ਆਏ ਜੀ ਜਿਹੜੇ ਇਹ ਪੱਥਰ ਸੀ ਕੀ ਕਹੀ ਕੋਟ ਬਰੀ ਬੋਲਦਾ ਪੱਥਰ ਬਿਰਖ ਨੇ ਬੁਝਾਇਆ ਪੱਥਰ ਬਿਰਖ ਨੇ ਬੁਝਾਇਆ ਬਿਰਖ ਦੇ ਨਾਲ ਪੱਥਰਾਂ ਬਿਰਖ ਦੇ ਬਹੁਤੇ ਪੱਤੇ ਹੁੰਦੇ ਨੇ ਛਾਂਉਂਦੀ ਹੈ ਬਹੁਤੀ ਛਾਂ ਉਹਦਾ ਮਤਲਬ ਹੈ ਕੋਈ ਬੱਤ ਦਾ ਢਾਂਡੀ ਕੋਈ ਗੁਰੂ ਹੈ ਕਈ ਕੋਟ ਪਾਥਰ ਬਿਰਖ ਨਿਭਜਾਏ ਕਈ ਕੋਟ ਪਾਥਰ ਬਿਰਖ ਪਥਰਤਾ ਹੈ ਉਹਦਾ ਮਨ ਮੁਗਧ ਪਾਥਰ ਨਾ ਪਥਰਤਾ ਹੈਗਾ ਸਾਖਤ ਜਿਹੜਾ ਨਹੀਂ ਚਲਦਾ ਜਿਹਦੇ ਸੱਚ ਦੇ ਬ੍ਰਹਮਾ ਹੂਕਾ ਕਹਾਣਾ ਮੰਨਦੇ ਜਿਹੜਾ ਹੈ ਨਾ ਉਹ ਪਥਰ ਜੇ ਲੈ ਬ੍ਰਹਮਾ ਖੁਦ ਵੀ ਆ ਕੇ ਕੋਈ ਨਹੀਂ ਸੀ ਭਗਤ ਹੋਰ ਕੋਣ ਨਹੀਂ ਰੱਬ ਦਾ ਉਤਾਰਿਆ ਨਾ ਭਗਤ ਗੁਰੂ ਨਾਨਕ ਦੇਵ ਸਾਹਮਣੇ ਜਿਹੜਾ ਪੱਥਰ ਪਿਗੜਿਆ ਨਹੀਂ ਨਮੋ ਹੁਕਮ ਕਰਵਾਉਣਾ ਉਹਦਾ ਕਹਾਣੀ ਬਣਿਆ ਪੁੱਤਰੀ ਕੌਲ ਨਾ ਪਾ ਰਹੇ ਹੋ ਕਰ ਵੀਰੋਂ ਕਾਲੂ ਬਠੀਏ ਉਹ ਪੱਥਰੇ ਸੀ ਹੋਰ ਕੀ ਸੀ ਅਜ ਬਣ اونے بھجائے او تھلے دی جڑوں کیوں کہ جدی نقصان کر گیا اور پبلک دا جدی ہور پبلک دا نقصان کر गया گور مطلبن توڑ گیا شاید انہاں جو بہت سارے اذی گور مطلبن جڑ جاندے جو کھڑے نہ ہوندا ون لا کے جو برخلاف نہ کھڑے ہون دے تگڑے ہو گئے سارے اے تے زیادہ بندے جس زیادہ بندے ਕੋਰੇ ਉਹ ਸਿੱਖੀ ਦੇ ਭੈਲਣੇ ਬੰਨ ਨਾ ਲੋਕਾਂ ਦਾ ਬਕਵਾਸ ਕਰੀ ਜਾਂਦੇ ਨੇ ਅਸੀਂ ਐਂ ਕਰਦੇ ਰਹੇ ਐਂ ਕਰਦੇ ਰਹੇ ਸਿੱਖੀ ਕਿੱਥੇ ਗਈ ਜੇ ਤੁਸੀਂ ਐਂ ਕਰਦੇ ਰਹੇ ਤੁਸੀਂ ਤਾਂ ਹੁਣ ਵੀ ਸਾ ਤੋਂ ਗੁਰੂ ਚੇਲਿਆਂ ਕੋ ਸਿੱਖੀ ਕਿੱਥੇ ਕਿਉਂਦੀ ਹੈ ਜਿੱਥੇ ਜਿੱਥੇ ਉਦਾਸੀ ਕਰਦੇ ਸੀ ਪ੍ਰਚਾਰ ਉੱਥੇ ਵੀ ਸਿੱਖੀ ਕਿੱਥੇ ਗਈ ਚਲੋ ਅਗਲੀ ਗੱਲ ਨੂੰ ਛੱਡੋ ਜਿੱਤੇ ਰਾਮ ਦੇ ਜੇਲੇ ਨੂੰ ਉੱਥੇ ਸਿੱਖੀ ਕਿੱਥੇ ਗਈ ਜਿਤੇ ਨਾਮਧਾਰੀਏ ਨੇ ਉਦੋਂ ਅਸੀਂ ਕਿੱਥੇ ਗਏ ਉਹ ਦਸੰਗ ਕਿਥੇ ਉਹ ਤਾਂ ਸੰਸਦ ਤੋਂ ਕਿਹਦੀ ਜਲੇ ਤਾਂ ਗਏ ਸਭ ਡਰ ਬੈਲੇ ਇਹ ਸਾਰੇ ਸਿੱਖੀ ਅਸਲੀ ਦੇ ਵਿਰੋਧੀ ਨੇ ਪਿੱਛੇ ਵਿਰੋਧੀ ਰਹੇ ਨੇ ਹੁਣ ਇਹ ਵਿਰੋਧੀ ਧਰੇ ਦਾ ਹੀ ਪ੍ਰਚਾਰ ਕਰਦੇ ਨੇ ਹੋਣ ਪਤਾ ਲੱਗ ਜੂਗਾ ਵਿਰੋਧ ਖੜਦੇ ਨੇ ਆ ਨਹੀਂ ਖੜਦੇ ਅਣ ਜਾਣ ਪੜੇ ਜੇ ਤਾਂ ਵਿਰੋਧ ਕਰਦੇ ਸੀ ਸਾਡਾ ਵਿਰੋਧ ਛੱਡ ਦੇ ਲਈ ਜੇ ਤਾਂ ਜਾਣ ਪੜੇ ਕਰਦੇ ਸੀ ਵਿਰੋਧ ਸਾਡਾ ਵਿਰੋਧ ਛੱਡ ਦੇਣਾ ਚਾਹੀਦਾ ਛੱਡ ਜੇ ਖੜੇ ਰਹਿਣਗੇ ਤਾਂ ਇਹਨਾਂ ਡਿਜੇ ਨੇ ਹੁਣ ਚਲੇ ਹੋਣਗਾ ਧਾ ਪਰਮੇਸ਼ਰ ਨਾਲ ਆਇਆ ਤਾਂ ਉਹਨੇ ਫਲਉਣੀ ਹੈ ਇਹਨਾਂ ਨੇ ਰੋਕਣੀ ਨਾ ਦੇਖਦਾ ਕੀ ਹੁੰਦਾ ਸਾਨੂੰ ਵੀ ਆ ਉਈ ਦਾ ਦੇਖਣਾ ਆਇਆ ਜੇ ਤੁਮ ਅਚਾਰ ਇਹਦਾ ਇੱਕ ਪਾਸੇ ਉਹ ਇੱਕ ਪਾਸੇ ਹੜ ਤਾਂ ਫਿਰ ਉਹੜਾਈ ਦੀ ਹੈ ਹੜ ਤਾਂ ਫਿਰ ਉਹੜਾਈ ਇਹਦਾ ਦਾਸ ਤੋਂ ਸੀਰੀਅਸ ਜੇ ਗੱਲ ਹੀ ਕਮੀ ਹੈ ਚਾ ਲੋਕਾਂ ਨੂੰ ਜਦ ਨਾਲ ਨਾ ਨਾਲ ਕਿਉਂਕਿ ਆਪਣੇ ਨਾਲ ਨਾਲ ਲੋਕਾਂ ਨੂੰ ਕਹਿੰਦੇ ਆ ਨਾਲ ਗੱਲ ਕਰ ਤੇ ਕੋਈ ਨਹੀਂ ਪ੍ਰਚਾਰ ਕਰ ਸਾਡੇ ਖਿਲਾਫ ਕਿਉਂ ਕਰਦੇ ਸਾਡੀ ਵਿਆਖਿਆ ਦੇ ਗਲਾਬ ਹੋਣਗੇ ਵਿਆਖਿਆ ਦੇ ਗਲਾਬ ਕਰਨਾ ਸਾਡੀ ਵਿਆਖਿਆ ਦੇ ਗਲਾਬ ਪ੍ਰਚਾਰ ਕਿਉਂ ਨਹੀਂ ਅਸੀਂ ਆਪਣੇ ਸੁਝਾਅ ਲਾਂਗੇ ਜਿੱਦੋਂ ਇਹਨਾਂ ਦੀਏ ਸੁਝਾਅ ਲਾਂਗੇ ਜੇ ਸਾਡੀ ਗਲਤੀ ਨਿਕਲੂਗੀ ਲੋਕ ਸਾਡੂ ਕਹਣਗੇ ਅਸੀਂ ਸੁਝਾਅ ਲਾਂਗੇ ਚਰਚਾ ਹੋ ਜੂਗੀ ਸੁਬਤ ਵਿੱਚ ਬੈਠ ਕੇ ਕੋਲੀ ਚੱਲੀ ਫੇਰ ਸਾਡੀ ਨੂੰ ਤੇ ਚੁੜੀ ਆ ਉਹ ਵੀ ਸਿੱਖੀ ਦਾ ਪ੍ਰਚਾਰ ਕਰਦੇ ਅਸੀਂ ਕਰਦੇ ਬਸ ਕਿਹੜੀ ਗੱਲ ਦਾ ਰੌਲਾ ਸਾਡੀ ਗੱਈ ਚੁੜੀ ਆ ਉਹ ਬੰਦੇ ਹੋਣਗੇ ਉਹ ਬੰਦੇ ਹੋਣਗੇ ਜਿਹੜੇ ਮੰਨਦੇ ਲੱਗਦਾ ਵੀ ਪ੍ਰਚਾਰ ਕਰੋ ਫਿਰ ਪਤਾ ਲੱਗ ਜੂਗਾ ਕਿਹੜਾ ਦੂਰ ਕਿਹੜੇ ਧੜੇ ਖੜਦਾ ਹੈ ਧੜੇ ਆਏ ਨੇ ਪਿਛਲਾ ਨਕਸ਼ਾ ਦਿਖਾਇਆ ਆਪਾਂ ਪਿਛਲਾ ਨਕਸ਼ਾ ਦਿਖਾਇਓ ਹੁਣ ਦੇਖਦੇ ਇੱਥੇ 300 ਸਾਲ ਚ ਕੀੇ ਸਕੇ ਇਤਿਹਾਸਕ ਹੈ ਉਹ ਜੀ ਮਤਲਬ 6-7 ਸਾਲ ਜੇ 5-6 ਸਾਲ ਤੱਕ ਹੋਏਗਾ ਕੋਈ ਨਾ ਸੁਣ ਤੇ 100 ਸਾਲ ਹੋ ਕਬੀਰੋਂ ਨਹੀਂ ਪਿੱਛੇ ਵੀ 100 150 ਸਾਲ ਉਹ ਮੇਰਾ ਹੈਬਚਰ ਬਾਣੀ ਤਾਂ ਥੋੜੀ ਸਭੋ ਹੀ ਆ ਕਬੀਰ ਤਾਂ ਹੀ ਆਇਆ ਉਹ ਬਾਣੀ ਤਾਂ ਜਰੂਰ ਤਾਂ ਪਿੱਛੋਂ ਵੀ ਆਈ ਆ ਅਹ ਆ ਤਾਂ ਕਬੀਰ ਤਾਂ ਹੀ ਆਇਆ ਹਾਂ ਉਹ ਤਾਂ ਜਿਹੜੀ ਅੱਜ ਸਾਡੇ ਕੋਲ ਮੌਜੂਦ ਹੈ ਉਹਨਾਂ ਦੀ ਚੱਕਰ ਤਾਂ ਉਦੋਂ ਵੀ ਪਹਿਲਾਂ ਦੀ ਹੈ ਜਿਹੜੇ ਕਹਿੰਦੇ ਜਿਹੜਾ ਬਹੁਤ ਸਾਡੇ ਕੋਲ ਨਾਰਦ ਦਾ ਸ਼ਹਿਰ ਉਹ ਹੈ ਅਫੇ ਸ਼ਹਿਰ ਹੈ ਨਾਰਦ ਦਾ ਨਾਰਦਨ ਉਸੇ ਕਬੀਰ ਉਸ ਜਮੀਤ ਬੈਠ ਕੇ ਬਾਹਰ ਉਹਨੇ ਸ਼ਾਇਦ ਤਾਂ ਬਾਅਦ ਚ ਹੋਇਆ ਹੈ ਕਿਸ਼ਕਰ ਨਹੀਂ ਉਹ ਉਹਦਾ ਨਾਮ ਉਹਨਾਂ ਨੇ ਤਕਬੀਰ ਤਕਬੀਰ ਕਰ ਰੱਖਤਾ ਸਿਸ਼ਟ ਬਣਾਤਾ ਸੋਜੀ ਕਈ ਕੋਟ ਪਵਨ ਪਾਣੀ ਪਸੰਦ ਕਈ ਕੋਟ ਦੇਸ਼ ਭੂਮੰਡਲ ਕਈ ਕੋਟ ਪਵਣ ਪਾਣੀ ਪੌਣੀ ਹੈ ਪਵਣ ਪਾਣੀ ਪੈਸਾ ਕਰ ਇਹਦੇ ਜਾ ਲਾ ਗਿਆ ਜਾਂਦੀ ਆ ਸਕਦਾ ਪਵਣ ਪਾਣੀ ਦੇ ਤੇ ਜੀ ਚੇਤਨਾ ਬਬੀਆ ਜਲਮਾ ਤੇਰਾ ਬਾਸ ਟਰੋਲ ਜਲਦੇ ਵਿੱਚੇ ਬਾਸ ਗਿਆ ਕੌਣ ਪਾਣੀ ਕੀ ਦੇ ਸਰੀਰਾਂ ਪਾਣੀ ਕੀ ਦੇ ਸਰੀਰਾਂ ਚੇਤਨ ਦੀ ਗੱਲ ਹੈ ਚੇਤ ਦੀ ਗੱਲ ਹੈ ਅੱਲਾ ਪੜੀ ਹਾਂ ਵਬੀਏ ਦਾ ਜਲ ਵਿੱਚ ਬਾਸ ਹੈ ਵਬੀਏ ਦਾ ਬਾਸ ਹੈ ਜਲ ਵਿੱਚ ਹੰਸ ਦਾ ਬਾਸ ਵੀ ਜਲ ਵਿੱਚ ਹੈ ਹੰਸ ਦਾ ਬਾਸ ਤਾਂ ਹੈ ਆਕਾਸ਼ ਵਿੱਚ ਪਰ ਸੰਗਤ ਆਉਣ ਦੀ ਹਵਾ ਵੀ ਸਬਾਹ ਹਵਾ ਲਾ ਜੋ ਆਪਣਾ ਉਤੋਂ ਆ ਗਿਆ ਨਾ ਸੱਚ ਛੱਡ ਤੋਂ ਟੁੱਟ ਕੇ ਹਵਾ ਟੁੱਟ ਗਈ ਆਕਾਸ਼ ਆ ਉਹ ਇਕੱਠੇ ਖੜੇ ਨੇ ਸਾਧ ਸੰਗ ਜਿਹੜੀ ਹਵਾ ਟੁੱਟੀ ਆ ਟੁੱਟੀ ਆ ਜਲ ਨਾਲੋਂ ਇਹ ਹਟਿਆ ਆਪਣੇ ਸ਼ਬਦ ਨਾਲੋਂ ਤੇ ਤੇਰਾ ਛੁੱਟਿਆ ਸ਼ਬਦ ਨਾਲੋਂ ਇਸ ਸ਼ਬਦ ਤੋਂ ਹਟ ਕੇ ਬਾਣੇ ਤੋਂ ਹਟ ਕੇ ਆਪਣਾ ਬਾਣਾ ਸ਼ੁਰੂ ਕਰ ਲਿਆ। ਇਹਦੇ ਆਪਣਾ ਬਾਣਾ ਬਦਲ ਹੋਇਆ। ਆਪਣੀ ਇੱਛਾ ਬਦਲ ਹੋ ਗਈ। ਜੇ ਬਸਵਾ ਗਾ ਦੇ ਨੂੰ ਚ ਆਪਣੀ ਸਲਾਹ ਦੇਨੀ ਵੱਖਰੀ ਵੱਖਰੀ ਜਾਤ ਨੇ ਦੀ ਹਜ਼ਤ ਤੇ ਇਹ ਨਹੀਂ ਕਿ ਕਿ ਬਸਵਾ ਦੀ ਸਲਾਹ ਮੈਂ ਨਾ ਕੱਲਾ ਵੱਖਰੀ ਕਰਾਂ ਕੱਲੇ ਨਹੀਂ ਵੱਖਰੀ ਕਰਦਾ ਐਂ ਦੀ ਕਿਤੀਸਲਾ ਵੀ ਆਪਾਂ ਐ ਕਰ ਦਈਏ ਕਿਵੇਂ ਕਰੀਏ ਕਿ ਕੋਈ ਅਕੇ ਮੈਂ ਕਰੀਏ ਇੱਕ ਕੋਈ ਐਂ ਕਰ ਐਂ ਕਰ ਦਈਏ ਉਹ ਕਹਿੰਦਾ ਨਹੀਂ ਆਈ ਨਹੀਂ ਠੀਕ ਚਲੋ ਠੀਕ ਹੈ ਜੇ ਕਹੇ ਐਂ ਕਰੋ ਕਰਨਾ ਚਾਹੀਦਾ ਇਹ ਹੰਕਾਰ ਹੈ ਕਰੋ ਇਹ ਹੰਕਾਰ ਹੈ ਐਂ ਕਰ ਲਈਏ ਕਿ ਨਾ ਕਰ ਲਈਏ ਹਸਤਾ ਹੈ ਇਸ ਤਰ੍ਹਾਂ ਇਹ ਵਿਚਾਰ ਇੱਥੇ ਹੀ ਫਰਕ ਹੈ ਜੇ ਜੱਲ ਲੈ ਕਰ ਦਈਏ ਕਾਇਮ ਆਏ ਬੇਕਾਲ ਜੇ ਤਾਂ ਐਂ ਕਹਿਤਾ ਕਿ ਕਲ ਪਾਈਂ ਐ ਕਲੋ ਕੰਮ ਕਰ ਲਈਏ ਤਾਂ ਐ ਨਾਉ ਕਹਿਣਗੇ ਚਲੋ ਠੀਕ ਐ ਜੇ ਉਹਨਾਂ ਦੇ ਵਿੱਚ ਕੋਈ ਫਰਕ ਆ ਫੇਰ ਸੁਝਾ ਦਿਓ ਉਹ ਐ ਵਿਚਾਰ ਵਿਚਾਰ ਮਾੜੀ ਨਹੀਂ ਜਾਲੂਨ ਨਾ ਕਰੋ ਮਾੜਾ ਨਿਰਣਾ ਕਰਕੇ ਹੁਕਮ ਨਾ ਦੇਦੋ ਮਾੜਾ ਹੁਕਮ ਭੋਗ ਮਾਰਾ ਮੈਂ ਤਾਂ ਫੈਸਲਾ ਕਰਕੇ ਕਹਿਤਾਂ ਗਿਰੋ ਜੇਕਰ ਫੈਸਲਾ ਕਰਕੇ ਆਪਾਂ ਵੀ ਕਹਿਤਾ ਤੱਲੇ ਨਹੀਂ ਐ ਕਰਨਾ ਚਾਹੀਦਾ ਐਂ ਹੀ ਕਰਨਾ ਚਾਹੀਦਾ ਸੀ ਤੇ ਪਿੱਛੋਂ ਕਹਿਤਕਦੇ ਇੱਥੇ ਹੋਵੇ ਇਹ ਅਬਵੇਕ ਦੇਖੀਏ ਅਬਵੇਕ ਅਬਵੇਕ আর ਬਵੇਕ ਦੀ ਲੜਾਈ ਹੈ ਅਗਾ ਦਾ ਸਮਝਾਤਾ ਇਹ ਅਵਿਵੇਕ ਹੈ ਉਹ ਬਵੇਕ ਹੈ ਇਹਦੀ ਲੜਾਈਆਂ ਅਵਿਵੇਕਰ ਬਵੇਕ ਦੀ ਅਵਿਵੇਕ ਭਰਮ ਦਾ ਰਾਜਾ ਭਰਮ ਵਾਲੇ ਤੁਹਾਡੇ ਚ ਪਰਮ ਕ੍ਰੀਏਟ ਕਰਨਾ ਸਾਰਿਆਂ ਨੂੰ ਜਿਵੇਂ ਆ ਇੱਕ ਦੋ ਪਰਮ ਦੀ ਕ੍ਰੀਏਟ ਕਰਦੇ ਇੱਕ ਸਰਕਾਰ ਕੱਪ ਕਰਦੇ ਦੂਏ ਪਰਮ ਕ੍ਰੀਏਟ ਕਰਦੇ ਨਹੀਂ ਕਰਦਾ ਐਸੇ ਭਾਂ ਦਸਨੇ ਪਰ ਪੈਦਾ ਹੋ ਕੇ ਜਾਂ ਤਾਂ ਇਹ ਰਹਿ ਗਈ ਇਥੇ ਬਵੇਕ ਰੋ ਦੀ ਪਰ ਉਹ ਬੇਟੀ ਤੇ ਕੋਈ ਵੀ ਨਹੀਂ ਅਜਿਹਾ ਬੇਟੀ ਹੈ ਕੱਲ ਉਹ ਬੇਟੀ ਵਸਨਦਾ ਜਦੋਂ ਸਵੇਰ ਤੋਂ ਲੈ ਜਾ ਜਾਂਦਾ। ਉਹ ਬੇਦਰਬ ਬੇਖ ਦੀ ਲੜਾਈ ਹੈ। ਬਸ। ਬਚਾਰ ਔਰ ਵਿਚਾਰ ਦੀ ਲੜਾਈ ਹੈ। ਕਿਉਂਕਿ ਵਿਚਾਰ ਹੈ ਜਿੱਥੇ ਵਿਚਾਰ ਹੈ ਉੱਥੇ ਵਿਚਾਰ ਨਹੀਂ ਹੋਏ। ਜਿੱਥੇ ਬਚਾਰ ਨਹੀਂ ਉੱਥੇ ਵਿਚਾਰ ਤਕਾ ਤਕਨੂ ਦੇ ਵਿਚਾਰ ਕਰਨ ਦੇ ਚਾਹ ਕਿਸੇ ਕਿਸਮ ਦੇ ਨਵੀ ਤੱਕ ਤਕਾ ਦੇ ਵਿਚਾਰ ਦੇਖੋ ਇਹ ਵਿਚਾਰ ਹੈ ਵਿਚਾਰ ਅਚਾਰਨ ਦੇ ਵਿਚਾਰ ਆਚਾਰਨ ਤੇ ਢਲਾਫ ਅਜਾ ਜਿਹੜਾ ਆਚਾਰ ਹੈ ਉਹ ਚਾਹੀਦਾ ਸੰਕਰ ਆਚਾਰ ਨੂੰ ਪਾਣੀ ਕਈ ਕੋਟ ਪਾਣੀ ਪਸੰਦ ਕਰ। ਰਮਣ ਪਾਣੀ ਆ। ਜਿਹੜਾ ਜੈ ਸਰੀਰ ਹੈ ਸਾਡਾ। ਜਿਹੜਾ ਤਾਂ ਮਨ ਉਹ ਤਾਂ ਖੂਨ ਦੇ ਵਿੱਚ ਪਾਣੀ ਦੀ ਗੱਗਗ ਹੈ। ਜਿੱਧਰ ਘੁੰਮਦਾ ਦੌੜਾ ਘਟ ਗਿਆ ਉਹ ਅੰਦਰ ਕੰਮ ਕਰਦਾ ਉਹਦੀ ਤਾਕਤ ਵੀ ਕੰਮ ਕਰਦੀ ਹੈ। ਉਹਦਾ ਸਰਕਲ ਖੂਨ ਦੇ ਵਿੱਚ ਵੀ ਕਰਦਾ ਵੀ ਤਾਕਤ ਜਿਹੜਾ ਹੈਗਾ ਅੱਧਾ ਧੂਆ ਕਿਠੇਸਾ ਇੱਕ ਪਾਸਾ ਆਪਤਾ ਹੋ ਹੈਗਾ ਹਵਾ ਨਾਲ ਉਸੇ ਪੁਜੀ ਸਿਚੁਐਲਿਟੀ ਸੀਗਾ ਤੋ ਕੀ ਹੋਇ ਨੈ ਤੇ ਦੋ ਕਿਵੇਂ ਹੋਇਆ ਆਪ ਦਾ ਹੋਇਆ ਧਿਆਨ ਇਧਰ ਕਰਤਾ ਉਹਦੇ ਪਹਿਲਾ ਆਤਮ ਕਹਿਦੀ ਦਾ ਆਤਮ ਧਿਆਨ ਦੀ ਤੋਂ ਬਾਹਰ ਧਿਆਨ ਹੀ ਹੋ ਗਿਆ ਸ਼ਰੀਰ ਦਾ ਤੇ ਨਹੀਂ ਹੋ ਜਾਏਗਾ ਤਿਰਕੁਟੇ ਜਾਂਦੇ ਹੰਦਮਾ ਗਏ ਜਾਂਦਾ ਫੇਸ਼ਨੀਰ ਦੂਰ ਤੋਂ ਪੱਬਲ ਆਦਮ ਧਿਆਨ ਦੀ ਹੁੰਦਾ ਆਦਮ ਧਿਆਨ ਹੋਣਾ ਇਹਨੂੰ ਕੁੱਲ ਗਿਆ ਪਿੱਛੜਿਆ ਹੋਇਆ ਕਰਬ ਚ ਆਦਮ ਤੇ ਸੀ ਆਦਮ ਤੇ ਅੱਦੀ ਦੇ ਬਿਨਾ ਕੱਪ ਨਹੀਂ ਹੋ ਸਕਦਾ ਆਦਮ ਤੇ ਆਦੇ ਤਾਂ ਆਟੋਮੇਟਿਕ ਅੰਤਾਰਨ ਕੱਲਾ ਆਏਗਾ ਸੀ ਜਦ ਤੱਕ ਪੀਸਰਾਂ ਦੇ ਬਾਅਦ ਕਈ ਕੋੜ ਤੋਂ ਪੀਸਰ ਹੁੰਦੇ ਕਈ ਕੋਟ ਆਟੋਮੇਟਿਕ ਅੰਤਾਰ ਤਪੀਸਰ ਹੈ ਕਦ ਕਰਦਾ ਹੈ ਇਮਾਨਦਾਰੀ ਨਾਲ ਕਦ ਕਰਦਾ ਹੈ ਇੱਕ ਮਨੁੱਖ ਅਡੋਲਤਾ ਵਿੱਚ ਕਦ ਕਰਦਾ ਹੈ ਉਹ ਤਪੀਸਰ ਹੈ ਕਪੀਆਂ ਦਾ ਈਸਰ ਹੈ ਕਪੀਆਂ ਦਾ ਵੱਡਾ ਤਪੀ ਹੈ ਕਪਾਂ ਸਿਰ ਤਾਪਾ ਉਹਨੇ ਕੋਲ। ਠੀਕ ਹੈ। ਔਰ ਆਦਮਾ ਚ ਅਸਤਾ ਨਹੀਂ ਹੁੰਦਾ। ਆਦਮਾ ਧਿਆਨ ਤੇ ਬਿਨਾ ਪਾਨ ਹੋਰ ਖੜਾ ਕਿੱਥੇ ਆ? ਜੇ ਆਦਮਾ ਧਿਆਨ ਨਹੀਂ ਆ ਤਾਂ ਹੀ ਤਕੀਸਰ ਹੈ। ਜੇ ਤਕੀਸਰ ਹੈ ਤਾਂ ਆਦਮਾ ਧਿਆਨ ਦੀ ਜਰੂਰ ਹੈ। ਜਿਆਦਾ ਅੰਦਰੋਂ ਡੁੱਟੂ ਮਨ ਸੇ ਤਖੜੂ ਹੈ। ਇਹ ਤਾਂ ਭਜੂਗਾ। ਮਿੱਲੇ ਤੋਂ ਰਸਾ ਖੋਲ ਜਾਂਦਾ ਜਿਆਦਾ ਖਾਦਾ। ਜਨਵਰ ਜੇ ਜਲ ਬੈਠਦਾ ਜੇ ਖਾਣ ਨੂੰ ਕੁਝ ਹੋਵੇ ਨਾ ਹੋਵੇ ਤਾਂ ਚੱਲ ਦੌੜ ਲਾਵੇ ਕਿਤਨੇ ਵੇਖੋ ਬਿੜੂ ਖੜਾ ਟੱਕੇ ਜਾਂਦਾ ਸਵਾ ਪਿੱਛੋਂ ਆਇਆ ਜਨਵਰ ਹਾਜ਼ਰ ਨਹੀਂ ਰਹਿ ਸਕਦਾ ਬੱਚੇ ਬਿਨਾਂ ਜੇਲਾ ਤਾਂ ਹੈ ਉਹ ਹੈਗਾ ਕਾਰਨ ਜੁੜਿਆ ਹੋਇਆ ਜਿਹੜਾ ਤਫਸੀਰ ਸੀ ਤਪੀਸ਼ਰ ਵਾਲਾ ਗੁਣ ਛੱਡਿਆ ਦੀਆਂ ਨੇ ਅੱਦੇ ਕੋੜਾ ਉੱਤਰ ਲਿਵਿਸ਼ੁਡ ਕੀ ਆ ਜਿਹੜੀ ਲੱਗੀ ਤ੍ਰਿਸ਼ਨਾ ਆਹੀ ਫਰਕ ਪਿਆ ਹਵਾ ਆਲਾ ਤਹਵਾ ਸੋਤਾ ਜੁ ਫਿਰ ਨਹੀਂ ਆ ਪਕਾਜ ਵਿੱਚ ਆਏ ਪਰਮਦੇਵ ਅੰਦਰ ਤੋਂ ਜੋ ਬਾਹਰ ਦੀਆਂ ਆਂਡੇ ਤੋਂ ਦੇਖੋ ਹੂਟਾ ਅੰਦਰੋਂ ਪਰਮ ਕਾ ਬੁਨੇ ਪਿਆ ਪਰਗਾਸਾ ਕੁਝ ਸਾਦੀ ਘਰਵਲ ਵਾਲੀ ਗੱਲ ਹੋਣੀ ਆ ਉੱਥੇ नहीं ਨਹੀਂ ਹੋਇਆ ਠੀਕ ਹੈ ਕਿਤੇ ਬਹੁਤ ਕਨਫਿਊਜ਼ਲ ਹੋਗਾ ਤੁਹਾਨੂੰ ਪਿੱਛੇ ਜੇ ਆਂਡਾ ਫਟਿਆ ਨਹੀਂ ਡਾਲ ਕੇ ਬਣੇਗੀ ਕੋਈ ਡਾਲਣੀ ਹੈ ਆਂਡਾ ਦਾ ਫਟਿਆ ਦੀ ਛਾਲ ਕੇ ਬਣੇਗੀ ਦਾਲ ਤਾਂ ਹੋਣੀ ਜਦੋਂ ਬਿਨਾ ਹੀ ਦੋ ਆ ਸੰਜ ਵਿੱਚ ਪਰ ਉਹਨੇ ਅੰਡੇ ਵਿੱਚ ਵੀ ਇਹਨਾਂ ਦੋ ਵੀ ਆ ਪਰਮ ਦਾ ਐਡਾ ਸ਼ਰੀਰ ਤਾਂ ਵਿੱਚ ਇਨਾ ਗਾ ਇੱਕ ਜਰਾ ਆ ਆ ਸ਼ਰੀਰ ਦੇ ਵਿੱਚ ਇਹ ਉਸੇ ਹੱਥ ਜਾਂ ਸ਼ਰੀਰ ਹੈ ਤੁੱਦਰੇ ਅਗਿਆਤਤਾ ਫੇਰ ਵੀ ਉਹੀ ਬਣੀ ਪਈ ਐ ਜਿਹੜਾ ਜਿਹਦਾ ਗਿਆਨ ਸੀ ਉਸਦੇ ਨਾਲ ਕੁਝ ਵਾਦਾ ਹੋਇਆ ਸਾਡੇ ਨੂੰ ਪਛਪਨ ਤੋਂ ਅੱਪਾ ਹੰਡਾ ਹੰਡਾ ਕੇ ਹੈਲਥਨ ਹੋਇਆ ਤਾਂ ਹੋਣ ਲੱਗਿਆ ਸੀ ਉਹ ਉਹੀ ਵਾਦਾ ਹੈ ਜਿਹੜਾ ਆਪਾਂ ਨੇ ਆਪਣਾ ਦੇਖਿਆ ਬਾਹਰ ਸੁਣਿਆ ਸੀ ਜਿਹੜੇ ਤਰੀਕੇ ਨਾਲ ਸੁਣਿਆ ਸੀ ਉਹ ਵਾਦਾ ਹੋ ਗਿਆ ਸੀ ਕਥਾ तो ਹਮ हो ਜਾਂ ਜੀ ਖੜਾ ਜੀ ਨਾਂ ਹੋ ਛੱਪੜ ਦਾ ਪਾਣੀ ਜਿਆ ਸੁਣਿਆ ਆਮ ਗਿਆਨ ਹੋਈ ਜਿਸ ਸਟੈਂਡ ਕਰਿਆ ਗਿਆਨ ਸੀਗਾ ਕਥਾ ਕਹਾਣੀ ਹੋ ਜੀ ਉਹ ਸੁਣਿਆ ਜਾਂਦੇ ਲੋਕ ਸੁਣੀ ਜਾਂਦੇ ਇਸ ਟਿਲ ਗਿਆਨ ਕਹਾਂ ਤੁਰਿਆ ਜਦ ਆਤਮ ਚਾਨ ਤਾਪ ਹੁੱਦਾ ਕੀ ਹੈ ਉਹਦਾ ਖੰਮੀ ਰੇਲ ਦਾ ਫਰਜ਼ੀ ਹੁੰਦਾ ਫਰਜ਼ ਠੀਕ ਹੈ ਮਾਲਾ ਫਿਰਦਸ ਠੀਕ ਹੈ ਭਗਤ ਜੀ ਲੋਕਾਂ ਨੂੰ ਮੰਨਿਆ ਹੋਏ ਨੇ ਸਾਰੇ ਉਹ ਤਾਂ ਇਹਨਾਂ ਨੇ ਬਾਹਰ ਹੁਲੇ ਸੱਜ ਖੜਨ ਵਾਲੇ ਨੇ ਇਹਨਾਂ ਨੂੰ ਕਲਪਤਿਆ ਪਾਉਂਦੇ ਨਹੀਂ ਰਹੇ ਇਹ ਉਸ ਦਿਨ ਦੇ ਮਗਲਾ ਤੇ ਡੁੱਬਣਾ ਉਹ ਆਗੇ ਨਾਲ ਵੱਡਾ ਟਰ ਕਰਕੇ ਜਾਂਦੇ ਨਹੀਂ ਇਹ ਤਾਂ ਡਬੋਈ ਬੈਠੇ ਤੇ ਸਭ ਕੁਝ ਰੱਬ ਕਰ ਦਿੰਦਾ ਕੀਤਾ ਹੈ ਨਾ ਦਾ ਉਹ ਖੋਲਦਾ ਰਹੇ ਬੰਦ ਕਰ ਦਿੰਦਾ ਉਹ ਖੋਲਦਾ ਹੈ ਬੰਦ ਕਰ ਦਿੰਦਾ ਇਹ ਹੀ ਦਾ ਬਾੜ ਰੋੜੇ ਨੇ ਉਹ ਕਿੱਥੇ ਹੈਂ ਹੋਤੀ ਹੈ ਰੋੜਾ ਹੋਰੋ ਬਾਟ ਦਾ ਕਬੀਰ ਆਪ ਰੋੜਾ ਇਸੀ ਬਾਟ ਦਾ ਉਹ ਕਹਿੰਦਾ ਜੇ ਰੋੜਾ ਵੀ ਹੋਣਾ ਬਾਟ ਦਾ ਤਾਂ ਉਹ ਮੰਨਦਾ ਨਾ ਕਰ ਤਜਮਨ ਕਹੋ ਭਾਨ ਜੇ ਉਹ ਨਹੀਂ ਹੈ ਫੇਰ ਵੀ ਪੋਜ਼ਿਟਿਵ ਆ ਦੋਬਰਾ ਹਾਲ ਹੈ ਇਹ ਜਿਹੜਾ ਹੈ ਹੈ ਸਾਖਤ ਹੰਕਾਰੀ ਹੈ ਸਾਖਤ ਆ ਜ਼ਰੂਰ ਹੈ ਜੇ ਸਾਖਤ ਹੈ ਦਿੰਦਕ ਵੀ ਜ਼ਰੂਰ ਹੈ ਇਹ ਸਾਖ ਤਬਿੱਦ ਕਰਨੇ کئی ਕੋੜ ਤੱਕ ਕੀਤੇ ਹੋਏ ਕਿਦੇ ਵਾਲੇ ਇਸ਼ਾਰਾ ਕਰ ਰਹੇ کئی ਕੋਟ ਲੋਕਾਂ ਨੂੰ ਪਾਣੀ ਬਸੰਤਰ ਅੱਗੇ ਨਹੀਂ ਪਿੱਛੇ ਪਿੱਛੇ ਲੋਕਾਂ ਨੂੰ ਪਾਣੀ ਬਸੰਤਰ ਦਿਖਾ ਲਾ ਦੇ ਚਲੋ ਉਹ ਤਾਂ ਹੋ ਗਏ ਉਹ ਤਾਂ ਕਰਦੇ ਵੀ ਕਈ ਕੋਟ ਪਾਥਰ ਨੇ ਬਜਾਏ ਪਾਥਰ ਬਿਰਖ ਨੇ ਬਜਾਏ ਉਹ ਥੱਲੇ ਰੁਕੇ ਆ ਗਏ ਖਾ ਗਏ ਕੋਟ ਕੋਪੜ ਪਾਣੀ ਬਸਾਉਂਦੇ ਕੋਪੜ ਪਾਣੀ ਬਸਾਉਂਦੇਈ ਕੋਟ ਦੇਸ਼ ਕੋਲ ਸਰੀਰ ਦੇ ਵਿੱਚ ਪਾਣੀ ਨਾਲ ਜੁੜਿਆ ਹੋਇਆ ਸੀ ਜਿਆਦਾ ਹੋ ਹੰਝੇ ਵਿੱਚ ਸਮਾਇਆ ਹੰਝ ਪੌੜ ਰੂਪ ਜੁੜਿਆ ਹੋਇਆ ਆਕਾਸ਼ ਦਾ ਵਿੱਚ ਹੁੰਦਾ ਹੀ ਹੈ ਪੌਣ ਦੇ ਵੀ ਪੌਣ ਨੇ ਆਕਾਸ਼ੇ ਰਹਿਣ ਆਵਾਜ਼ ਹੈ ਗਈ ਉਸੇ ਆਵਾਜ਼ ਤਾਂ ਹੈ ਗਈ ਹੈ ਪਰ ਇੱਕ ਤੱਤ ਦਾ ਸਰੀਰ ਉਹਦਾ ਪੌਣ ਦਾ ਔਰ ਪਾਣੀ ਵੀ ਚਾਹ ਦੇ ਬਸ ਜਦੋਂ ਬਾਸਟਰ ਹੁੰਦੀ ਹੈ ਆਵਾਜ਼ ਮਹਾਜਰ ਨਹੀਂ ਹੁੰਦੀ ਪਾਣੀ ਹੈਗਾ ਔਰ ਪਾਣੀ ਹੈਗਾ ਉਹ ਮੰਨਦਾ ਉਹ ਪਾਣੀ ਚ ਸਮਾ ਗਿਆ ਉਹ ਪੌਣ ਦੇ ਨਾਲ ਹਾਂ ਉਹਨੇ ਮੋਚੇ ਮੋਚੇ ਉਹਦੇ ਵਿੱਚ ਮਨ ਸਮਾ ਉਹਦਾ ਜਵਾਨ ਦਾਨੇ ਜਜੇ ਮੋਚੇ ਕਰਤੀ ਫੜਾ ਕੇ ਜਦੇ ਪੈ ਜੀਵ ਜਾਨ ਜਿੱਤੇ ਜਾਲਾ ਉਤੇ ਜੀਵ ਰਹੂ ਉਹ ਸੰਤਨ ਤਾਂ ਸੰਤਰਾਗ ਨਹੀਂ ਹੈ ਅਥੇ ਦਾ ਅਥੇ ਕੌਣ ਪਾਣੀ ਬੈਸ ਅੰਦਰ ਅੰਦਰ ਬੈਠੇ ਨੇ ਕੌਣ ਬਣਦੇ ਨੇ ਅੰਦਰ ਅੰਦਰ ਬੈਠੇ ਨੇ ਇਹਦਾ ਅਰਥ ਇਹ ਨਹੀਂ ਹੈ ਕਿ ਤੇਰੀ ਵਸਤ ਹੋਵੇ ਸਗਲ ਬਨਸਪਤ ਅੰਦਰ ਬੈਠੀ ਹੈ ਅੰਦਰ ਬੈਠਣ ਵਾਲੀ ਕੀ ਹੈ ਉਹਦੇ ਅਗਭੀਆ ਪਾਣੀ ਵੀ ਹੈ ਔੜੀ ਵੀ ਹੈ ਪਾਣੀ ਦੀ ਅਗਨ ਉਹ ਵਿੱਚ ਪਾਣੀ ਬੈਠਾ ਹੈ ਬਣਸਪਤੀ ਦੇ ਉਹਦੇ ਵਿੱਚ ਅੱਗ ਵੀ ਬੈਠੀ ਹੈ ਵਿੱਚ ਅੱਗ ਵਿੱਚੇ ਵੱਡੀ ਹੈ ਕੋਣ ਕੋਣੀ ਇਹ ਜੀ ਅਸੀਂ ਉਹ ਅਗਮੰਤ ਹੈ ਜਿਹੜੀ ਬਾਅਦ ਜਲਦੀ ਹੈ ਇਹ ਕਿੱਧਰ ਕਦੇ ਬੈਠੀ ਨਹੀਂ ਹੋਰ ਰੂਪ ਹੈ ਬੈਸਲ ਬੈਠੀ ਦੇਖੋ ਚਾਰੇ ਦਰੀਆਂ ਅੱਗੇ ਨੇ ਪਰਵਾਣਾ ਲਾਇਆ ਦਵਾ ਨਾ ਲਾਇਆ ਕਦੇ ਵੀ ਬਸੰਤਰ ਨਹੀਂ ਆਇਆ ਫਿਰ ਕੱਲ ਦੋਸਰਾ ਕਿ Pase ਆਉਂਦੇ ਨਹੀਂ ਆਉਂਦਾ ਜੀ ਮੈਂ ਬਸਤਰੇ ਹੋਇਆ ਤਾਂ ਜਿੱਥੇ ਵੀ ਹੋਊਗਾ ਕਿਛੇ ਵੀ ਬਸੰਤਰ ਜਾ ਕੇ ਕਪੜੇ ਤੋਂ ਹਾਂ ਬੈੜਾ ਸੰਤਰ ਜਾ साबड़ में अंदर बैठ गए तो वो कपड़े जा बारो को मैं तो दूंगा कोई असर जाऊंगा तो कपड़े तो हुआ साबड़ मैं लाऊंगा ये पैसा अंदर आ अंदर बैठना ही होता है इथे दो ने होण कौन बैठ देह भी है पानी दे अंदर भी है कौन पानी बैठ अंदर ਜੀਪ ਕੋਣ ਪਾਣੀ ਚ ਬੈਠ ਕੇ ਪਰਬ ਦੇਾਂਡੇ ਦੇ ਵਿੱਚ ਰਹਿੰਦਾ ਕੋਣ ਚ ਜਿੱਤਾ ਕਰਕੇ ਪਾਣੀ ਚ ਆ ਉਹ ਤਾਂ ਇਹ ਤੇ ਅਗਡੇ ਤੁਸੀਂ ਕੋਣ ਪਾਣੀ ਕਿਤੇ ذری لے گئے ਇੱਕ ਹੋਰ ਹੂ ਤੇ ਤੂੰ ਕਹਾਂ ਜਿਹੜੀ ਦੇਹੀ ਗੁਪਤਾ ਵਿਦੇਹੀ ਸਰ ਪਾਣੀ ਵਿਦੇਹੀ ਹੈ ਸਾਡੀ پکڑ ਦੇ ਇਹ ਪੌਣ ਪਾਣੀ ਵਾਲੀ ਜਿਹੜੀ ਇਹ ਵਿਦੇਹੀ ਹੈ ਇਹ ਪੌਣ ਪਾਣੀਓ ਛੜਣਾ ਆਕਾਸ਼ ਦਾ ਜਿਹੜਾ ਸਰੀਰ ਹੈ ਆਕਾਸ਼ ਵਾਲਾ ਉਹ ਆਕਾਸ਼ ਅੰਬਰ ਜਿਹੜਾ ਪੀਤਾ ਹੋਇਆ ਉਹਦਾ ਗੁਪਤ ਹੈ ਅੰਬਰ ਗੁਪਤ ਨਹੀਂ ਚੇਤਨ ਦੇ ਵਿੱਚ ਅੰਬਰ ਗੁਪਤ ਹੁੰਦਾ ਹੈ ਅਕਾਸ਼ ਜਿਹੜਾ ਚੇਤਨ ਪੀਤਾ ਕੀਤਾ ਹੋਇਆ ਹੁੰਦਾ ਹੈ ਰੋਸ਼ਨੀ ਦਿੱਤੀ ਹੈ ਅਕਾਸ਼ ਜੀ ਨਾਲ ਤੇ ਫਿਰ ਜੋ ਧੀਨਾ ਉਹ ਹੋਰ ਕੁਝ ਆ ਜੋ ਦੇਹੀ ਦੀ ਨਾ ਅਕਾਸ਼ ਇਹ ਗगन ਉਹ ਸਰੀਰ ਹੈ ਉਹਦਾ ਸਰੀਰ ਪਰਮੇਸ਼ਰ ਦਾ ਪੁਰਾਣਾ ਸਰੀਰ ਹੈ ਇਹਦਾ ਗੁਪਤ ਨਹੀਂ ਹੈ। ਉਹ ਵਿਦੇਹੀ ਹੈ ਗੁਪਤੇ ਰਹਿੰਦੀ ਹੈ। ਅਜਿਹੇ ਜੀਵ ਇਹ ਪਾਣੀ ਦਾ ਸਰੀਰ ਹੈ ਵਿਦੇਹੀ ਹੈ। ਜੇ ਇਹ ਵੀ ਹੈ ਜੋਦੀ। ਜੇ ਇਹ ਦੇਣਾ ਜੋਦ ਕਰਨਾ ਹੈ। ਮਾਇਆ ਬ੍ਰਹਮ ਦਾ ਫੈਸਲਾ ਮਾਇਆ ਉੱਤੇ ਕੀ ਹੈ? ਉਤੇ ਦਾ ਕਾਜ ਦਾ ਤਰਮਾਇ ਕੱਲਾ ਹੈ। ਮਾਇਆ ਨਹੀਂ ਹੈ। आया तो छुपा भी दुनिया का फोन पानी हुई है फोन पानी हो गई है भाई ये नहीं है ये भी गुप्त हो गई ये आकाश से गुप्त हो गई आकाश होच गुप्त हो गया असल में माया और वो गुप्त होती है जबो कल्ला सुन आसमान लगाऊंगा ना फरमाया वो गुप्त होती है नहीं होती ਉਹ ਦੀਨਾ ਦੇਹੀ ਦੀ ਦੀ ਇਹ ਤੇ ਦੇਹੀ ਦੀ ਦੀ ਇਹ ਹੀ ਦੀ ਦੀ ਦਾ ਆਏ ਗਏ ਜਦ ਉਹਦਾ ਦਰਸ਼ਨ ਆ ਉਹਦੀ ਦੇਹੀ ਦੀ ਦੀ ਜੇ ਜੀਵ ਦਾ ਦਰਸ਼ਨ ਆ ਤਾਂ ਜੀਵ ਦੀ ਦੀ ਉੱਠਾ ਮਾਇਆ ਦੇ ਜਿਹੜਾ ਜੀਵ ਹੈ ਉਹਦਾ ਸਰੀਰ ਵੀ ਨਾ ਉਹਦੀ ਦੀ ਦਾ ਜਿਹੜਾ ਬ੍ਰਹਮਾ ਉਹ ਬ੍ਰਹਮ ਦੀ ਉਹਦਾ ਸਰੀਰ ਦੀ ਦੀ ਗੋਪਤ ਜੀ ਸਵੀਰ ਗੋਪਤ ਜਿੱਤੇ ਰੂਪ ਨਾ ਨਾ ਮੋਕ ਕਹਿੰਦਾ ਕਹਿੰਦੇ ਉਹ ਆ ਪਾਣੀ ਦੇ ਹੈ ਬੰਦਾ ਬੱਚੇ ਜੇ ਜਾਵਾਗੇ ਦੋ ਜਦ ਆ ਜਬ ਪਵਨ ਰੂਪ ਹੋ ਜਾਵੇ ਪਵਨ ਵਿੱਚ ਹਵਾ ਹੁੰਦੀ ਹੋਈ ਹੈ ਨਾ ਪਾਣੀ ਹੁੰਦਾ ਹੀ ਹੈ ਪਾਣੀ ਪੈਦਾ ਨਹੀਂ ਹੁੰਦਾ ਹੁੰਦਾ ਹੈ ਪਾਣੀ ਰੂਪ ਢੱਗੇ ਪਵਨ ਰੂਪ ਰੂਪ ਹੋਊਗਾ ਜੀ ਜਿਤੋਂ ਤਾਂ ਹੈਗੀ ਹੈ ਪਾਣੀ ਬੰਗੂ ਉਹ ਧੋਏਗਾ ਨਾ ਪਾਉਣ ਨੂੰ ਹੋ ਜਾਂਦਾ ਹੈ ਨਾ ਪਾਉਣ ਰੂਪ ਰੂਪ ਜਿਹੜਾ ਪਾਣੀ ਹਵਾ ਦੇ ਵਿੱਚ ਹੈ ਪਾਉਣ ਰੂਪ ਹੈ ਹਾਂਜੀ ਪਾਉਣ ਰੂਪ ਵਿੱਚ ਵੀ ਪਾਉਣ ਰੂਪ ਹੈ ਬੱਦਲ ਵੀ ਪਾਉਣ ਰੂਪੇ ਹੁੰਦਾ ਹੈ ਹਾਦਰ ਤੇ ਤੇ ਵੀ ਇਹ ਹੈ ਪਰਮੇਟ ਦੇ ਵਿੱਚ ਹੀ ਹੈ ਪਵਨ ਰੂਪੇ ਨੇ ਹਾਂਜੀ ਕੋਟ ਪਵਨ ਪਾਣੀ ਬਸੰਤਰ ਕਈ ਕੋਟ ਦੇਸ਼ਪੂ ਮੰਡਲ ਕਈ ਕੋਟ ਦੇਸ਼ਪੂ ਮੰਡਲ ਦੇਸ਼ਪੂ ਮੰਡਲ ਦੇਸ਼ ਨੇ ਪੂ ਮੰਡਲ ਨੇ ਵੱਡਾ ਹੁੰਦਾ ਗੋਲ ਇਹ ਜਿਹੜਾ ਹਿਰਦਾ ਹੈਗਾ ਇੱਕ ਦੇਸ਼ ਬੂਈ ਹੈ ਜਿਹੜਾ ਕੇ ਦੇਸ਼ ਜਾਏ ਤਾਂ ਸੁਪਰਹਿਨ ਮਹਲ ਇਹ ਜੇ ਵਿਸ਼ਾਲ ਹਿਰਦੇ ਵਾਲੇ ਵੀਰ ਜੀ ਜਾਣੋ ਦੇਸ਼ਪੂ ਮੰਡਲ ਜਿੱਡੇ ਜਿੱਡੇ ਗਿਆਨ ਰੱਖਣ ਵਾਲੇ ਵੀ ਜਿਹੜੇ ਇੱਕ ਦੁਨੀਆ ਨੂੰ ਜਿਨ੍ਹਾਂ ਨੇ ਦੇਖੋ ਸੁਆਣਾਂ ਵਾਲਿਆਂ ਨੇ ਵੇਖੋ ਬਿੱਟੇ ਲੋਕ ਕਿੰਨਾ ਮਗਲਾਈ ਦੇਖੋ ਦੇਸ਼ ਮਗਲਾ ਨਾ ਉਹ ਹੱਦ ਹੈ ਜਨਾ ਚਾਹਣ ਸੀ ਦੇਸ਼ ਨੂੰ ਉਹ ਮੱਟਰ ਵਰਗਾ ਇਰਤਾ ਸੀ ਉਹ ਘਾਤੋਂ ਬੁੱਤ ਨੇ ਕਿੰਨੇ ਸਾਥ ਗਿਆ ਜੇ ਗੰਦਾ ਆ ਜਵਾਬ ਦੇ ਸੀ ਲੋਕਾਂ ਕੋ ਤਾਵਨ ਨਹੀਂ ਹੈ ਕਾਨੂੰ ਨਹੀਂ ਨਹੀਂ ਜਾ ਸਕਦੀ ਇਹ ਜਿਹੜੀ ਉਹਦੀ ਜਿਹੜੀਆਂ ਮੱਤਾ ਨੇ ਲੋਕ ਬੁੰਦੇ ਨੇ ਅਜਾਦਾ ਮੈਂ ਨਹੀਂ ਇਹ ਬੁੱਧ ਮੱਤਾ ਦਾ ਸਵਾਮ ਜਾਇ ਸਾਈ ਦੇ ਤਨਸਾਈ ਨਾ ਚਲ ਹਿੰਦੂ ਗੱਤ ਵੀ ਹੈ ਉਹ ਇਹ ਇਹ ਦੇਸ਼ ਬੂ ਬਲਟਰ ਨੇ ਪੂਰੇ ਦੇਸ਼ ਨੂੰ ਦਿਖਾਇਆ ਹੋਇਆ ਨਾ ਮਤ ਕਈ ਕੋਟ ਸਸੀਲ ਸੂਰਨਖਤਰ ਕਈ ਕੋਟ ਦੇਵਦਸ ਦਾ ਮਤਲਬ ਹੈ ਭਗਤੀ ਕਿੰਨੇ ਪ੍ਰਕਾਰ ਦੀ ਹੈ ਸਭ ਭਗਤੀ ਹਾਂਜੀ ਕਈ ਕੋਟ ਸਸੀਲ ਸੂਰਨਖਤਰ ਕਈ ਕੋਟ ਸਸੀ ਉਹ ਸੂਰ ਅਨਖਤਰ ਆ ਗਿਆ ਕਈ ਕੋਟ ਦੇਵਦਸ ਸਸੀ ਦਾ ਮਤਲਬ ਹੈ ਰੋਸ਼ਨੀ ਆਲੇ ਚਿੱਤ ਜੀਨ ਦੇ ਰੋਸ਼ਨੀ ਜਿਹਨੂੰ ਰੋਸ਼ਨੀ ਦਿਮਾਗ ਕਹਿੰਦੇ ਨੇ ਲੋਕ ਏ ਵੀ ਕੋਈ ਗਰੋੜ ਨੇ ਆ ਜਾਨਵਾ ਬਹੁਤ ਗਿਆਨ ਚਾਰਦਾ ਨੇ ਉਸ ਸਰੇ ਤੇ ਜਾ ਕੇ ਇਹੜੇ ਹੋਏ ਨੇ ਥੋੜੇ ਜੇ ਬਹੁਤ ਕੁਝ ਜਾਣਦੇ ਨੇ ਵੀ ਵੀ ਤੁਰਾਂ ਆਂਦੀ ਨੇ ਉਹ ਦੱਸਦੇ ਨੇ ਕਿ ਕੁਛ ਹੈਗਾ ਤੂ ਜੇ ਪ੍ਰਾਲਾ ਸਮਾ ਪਾਜੀ ਸਕਦੀ ਹੈ ਐਂਗਾ ਸਮਝੋ ਵੀ ਵਾਰ ਕੁਛ ਹੈ ਦੀ ਜਿਹੜੀ ਅਸੀਂ ਕੋਈ ਕੋਸ਼ਿਸ਼ ਕਰਦਾ ਉਹ ਦੱਸ ਨਹੀਂ ਹੁਣ हां उने ते गल करना ਪਹੁੰਚੇ ਜੇ ਗੱਲ ਪਹੁੰਚੇ ਪੜ ਸਕਦੇ ਨੇ। ਜੇ ਕੋਈ ਵੀ ਸਾਡੇ ਇਹਨਾਂ ਨੂੰ ਮੇਰੇ ਨਹੀਂ ਹੁੰਦਾ। ਮੇਰੇ ਪਹੁੰਚਦੀ। ਹਾਂ ਉਹਨਾਂ ਦੋਆਂ ਦਾ ਨਟ ਵਰ ਗਿਆ ਨਾ ਪਹੁੰਚੇ ਰਹਿਣ ਵਾਲਿਆ ਦਾ। ਮੈਂ ਤਾਂ ਬੈਂਕ ਲਾਤੇ ਸੀ ਤੋਂ ਸੰਦਾਂ ਕੋਈ ਫਾਰਕ ਵੀ ਸੰਦ ਤੋਂ ਬਾਹਰ ਵੀ ਜਾ ਸਕੂ। ਐਸੇ ਕਿਹਾਂ ਗੱਲਾਂ ਨੇ ਲੋਕ। ਉਹ ਮਟਰਵਾ ਇੰਨਾ ਤਰਕ ਮਾਰਦੇ ਸੀ 5000 6000 ਸੀ। ਇਸੇ ਲੋਕ ਬਗੀ ਨਹੀਂ ਰਹੇ ਕੰਮ ਕਰਦੇ ਆਪ ਹੀ ਬਾਹਰ ਆ ਕੇ ਸਭ ਨੂੰ ਓਕਾ ਕਰਦੇ ਜਾਂ ਸਿਰਕੇ ਆ ਜਾਂਦੇ ਬਾਰ ਆਪਣੇ ਆਪਣੇ ਹੋੜੇ ਬੈਨ ਲਾਉਣ ਲੱਗੇ ਤੇ ਵੀ ਸਰਬ ਪਰ ਤੇ ਬੈਨ ਲਾਉਣ ਲੱਗ ਪਏ ਸੋਣ ਲਾ ਦੋ ਸਭ ਇਕੋ ਹੀ ਰਹਾ ਧਰਮ ਡਿਵੈਲਪਮੈਂਟ ਕਰਨੀ ਚੀਜ਼ ਹੈ ਡਿਵੈਲਪਮੈਂਟ ਥੋੜੀ ਬਹੁਤ ਡਿਵੈਲਪਮੈਂਟ ਦਾ ਨੌਦਾਰ ਗੁੱਸਾ ਪਾਣਿਕ ਬਗਾਦ ਨਹੀਂ ਬਹੁਤ ਡਿਵੈਲਪਮੈਂਟ ਦਾ ਨੋਟ ਅਰਬਿਟ ਡਿਵੈਲਪਮੈਂਟ ਕਮ ਬੰਦ ਕਰ ਦੋ ਕੋਈ ਤਾਂ ਖੋਜ ਕੋਈ ਕਿਵੇਂ ਬੰਦ ਕਰੂ ਕੋਈ ਮੈਟਰ ਨਹੀਂ ਖੋਜ ਬੰਦ ਕਰ ਸਕਦਾ ਕੀ ਖਤਰਾ ਹੈ ਵੀ ਲੋਕ ਪੱਥਰਪੁਰ ਤੇ ਭਜਣਾ ਜਾਣਾ ਖਤਰਾ ਹੈ ਉਹ ਇਹਦੇ ਪੱਥਰਪੁਰ ਨੂੰ ਬਣਾਉਂਦੇ ਨੇ ਤੇ ਦੇ ਕੇ ਖਵਾ ਬਰੋਣਾ ਨੂੰ ਤਾਂ ਲੋਕ ਸੈਣੇ ਨੂੰ ਤੇ ਜਾਂਦੇ ਨੇ ਕਹਿਣ ਲੱਗੇ ਦੇਵਾਲੇ ਨੂੰ ਸੋਚ ਲੈ ਚੂੜੀ ਇਹਦਾ ਸੋਚ ਲੈ ਇਹਨੂੰ ਦਫਾ ਕਰੀ ਬਰਾਫੀ ਕਰਤੀ ਇਹ ਦੋ ਬੁਰੀ ਗੱਲ ਕੀ ਹੋਊਗੀ ਚੱਲਿਆ ਸਭ ਤੋਂ ਗੱਦੀ ਗਈ ਜੀ ਨਵੀਂ ਜਗ੍ਹਾ ਨੂੰ ਗਏ ਗੱਟਿਆ ਲਿਆ ਸਾਰਿਆਂ ਨੂੰ ਘਰ ਦੇ ਵਿੱਚ ਤੇ ਵਾ ਲੈ ਅਗਲੇ ਨੇ ਬਲਾਤਾ ਤੁਸੀਂ ਜਾਂਦੇ ਆ ਆਮ ਦੁਨੀਆ ਕਿਤੇ ਪਾਗਲੇ ਆ ਇਹ ਨਹੀਂ ਮੈਂ ਕੱਲ ਲੈ ਸੱਚਾ ਇਹਦਾ ਮਤਲਬ ਤੁਸੀਂ ਵੀ ਇਧਰ ਕੋਈ ਨਹੀਂ ਸਮਝਦੇ ਅੰਦਰੋਂ ਨਹੀਂ ਕੋਈ ਸਮਝਦੇ ਲੋਕਾਂ ਨੂੰ ਬੇਰਗੂਰ ਲੜੇ ਕੱਲ ਵੀ ਠੀਕ ਹੈ ਸੋਚਾਲੇ ਤੇ ਵੀ ਤਾਂ ਆਦਮੀ ਜਾਂਦਾ ਜਉਂਦਾ ਉਹ ਤੇ ਦਾ ਜਿਹੜੀ ਮੂਰਤੀ ਦਿਵਾਲਾ ਚ ਜਿਉਂ ਉਹਦੇ ਜੀਵਨ ਹੈ ਨਹੀਂ ਕੋਈ ਸੋਚਾਲੇ ਚ ਕੋਈ ਮੂਰਤੀ ਨਹੀਂ ਲਾਉਂਦਾ ਮੂਰਤੀ ਜੀ ਨਹੀਂ ਜਾਂਦੀ ਉੱਥੇ ਕਿਉਂ ਉਹਨੇ ਜਿਹੜਾ ਮੂਰਤੀ ਨੇ ਕੋਈ ਇਲੈਕਟ੍ਰੀਕਲ ਨਹੀਂ ਜਾਊਗੀ ਕੋਈ ਬਾਦ ਸੋਚਾਲੇ ਹਫਦਾ ਹੀ ਦਿਵਾਲਾ ਦੇ ਵੇਲੇ ਸੋਚਾਲੇ ਦਿਉਂਦਾ ਨਾਲ ਜੇ ਹੁੰਦਾ ਵੀ ਹੋਏ ਨੇ ਪੌਲਰ ਹੋਏ ਰਹਿੰਦੇ ਨੇ ਅਧਰਵਾ ਸੱਜੀ ਸੂਰ ਮ ਖਤਰ ਸੱਜੀ ਉਦਾ ਗਿਆਨਵਾਨ ਗਿਆਨਵਾਨ ਸੋਸ਼ੀਅਲ ਸੂਰ ਜਿਵੇਂ ਆਪਣੇ ਆਇਆ ਹੈ ਕੋਦਰ ਦੇ ਗਿਆਨ ਵਾਲਾ ਸੱਚੀ ਸੱਚੀ ਉਸ ਲਗਣਾ ਸੂਰਜੋਂ 더 ਜ਼ਿਆਦਾ ਹੋਰ ਗਿਆਨवान ਦੇ ਜਿਹੜੇ ਕਮਲ ਕਮਲ ਜਿਹੜਾ ਆਦਮੀ ਵਿੱਚ ਤਰਕ ਘੂੜ ਨੂੰ ਨਹੀਂ ਨੰਦੋ ਉੱਚੇ ਧਰਮ ਨੂੰ ਜਿਹੜਾ ਸਾਰੇ ਨੂੰ ਕੱਟ ਦਿੰਦਾ ਉਹ ਸੂਰਜ ਹੈ ਉਹਨੇ ਝੂਠ ਸਾ ਦੇਖ ਲਿਆ ਸੱਚੇ ਵੀ ਦੇਖਿਆ ਸੱਚੇ ਤੋਂ ਆਪੇ ਗੁਰੂ ਸੱਚ ਨੂੰ ਕਿੱਥੋਂ ਦੇਖਣਾ ਹਮ ਸੱਚ ਤੋਂ ਆ ਜੀ ਆ ਆਪੇ ਸੱਚ ਹੈ ਇਹ ਤੂੰ ਸਮਝ ਨਹੀਂ ਹੈ ਉਹ ਤਾਂ ਇਹ ਦੱਸਣਾ ਉਹ ਸੱਚ ਦਾ ਤੋਹੀ ਹੈ ਆਪਣੇ ਆਪ ਨੂੰ ਦੇਖ ਰਹਾ ਹਾਂ ਝੂਠ ਝੂਠ ਸੱਚ ਤੋਂ ਨਾਲ ਜੈਤ ਹੋਈ ਜਾ ਰਹਾ ਸੱਚ ਇਹਦਾ ਸੱਚ ਹੈ ਉਹ ਕਹਿੰਦੀ ਲੋੜ ਹੈ ਆ ਉਹ ਨਾਮ ਆ ਫਰ ਬਾਗਰ ਗਾਉ ਦੇ ਨਜ਼ਰ ਗੁਰੂ ਗਿਆਨ ਗਾਉਗਾ ਤਾਂ ਹੁਣ ਸੋ ਉਹ ਹੀ ਗੱਲ ਹੈ ਕੋਈ ਤੂੰ ਬ੍ਰਹਮਾ ਨੂੰ ਤਾਂ ਲੋਕ ਕਹਿੰਦੇ ਰਹੀ ਹੈ ਸੱਚ ਆ ਰਹੀ ਜੀ ਜੀ ਝੂਠ ਫਿਛਾਣ ਲਿਓ ਸੱਚ ਹਾਂ ਮੈਂ ਕਿਹਾ ਤਾ ਉਹਨਾਂ ਤਾਰੇ ਨੇ ਉਹਨਾਂ ਦੇ ਜੇਲੇ ਸਾਰੇ ਥੋੜੇ ਗਿਆਨ ਵਾਲੇ ਉਹ ਵੀ ਗਿਆਨਵਾਨ ਹੁੰਦੇ ਨੇ ਜਿਵੇਂ ਜੇਲੇ ਹੁੰਦੇ ਨੇ ਜੰਮਾ ਗੁਰੂ ਗੁਰੂ ਹੋਇਆ ਜੇਲੇ ਜੰਮਾ ਗੁਰੂ ਨੇ ਹਾਂ ਹਾਂ ਕੋਈ ਕੋੜ ਦੇਵ ਦਾਨਵ ਇੰਦਰਸ਼ਰ ਸ਼ਕਤ ਕੋਈ ਕੋੜ ਦੇਵ ਦਾਨਵ ਇੰਦਰ ਦੇਵੀ ਨਾ ਦਾਨਵ ਵੀ ਨੇ ਸਿਰ ਸੱਤ ਉਹ ਦੇਵ ਹੋਈ ਨਾ ਹਕਾਰੀ ਦਾ ਹੈਗੇ ਪਰ ਉਹ ਢਾਡੂ ਕੋਚਾ ਗੁਰਦਾਰੇ ਜਾ ਕੇ ਕਰਦੇ ਸੀ ਉਹ ਦਰਸ਼ ਬਾਕੀ ਸਭ ਕੁਝ ਕੋਈ ਹੈ ਸਮਝ ਉਹ ਨੇ ਬਹੁਤੀ ਹੋ ਕਰਦੇ ਉਹ ਗੁਰ ਸਮਾ ਹੁੰਦੇ ਨੇ ਦੇਵ ਜ਼ਿਆਦਾ ਹੀ ਹੁੰਦੇ ਨੇ ਦੇਵ ਦਾਨਵ ਉਹਨਾਂ ਦੇ ਖਰਾਬ ਨੇ ਜਿਹੜੇ ਜਿਹੜੇ ਜਿਹੜੇ ਉਹਨਾਂ ਕਹਿੰਦੇ ਨੇ ਯਾਥੋੜਾ ਪਖੰਡ ਤਾਰਮ ਇੱਕੋ ਧਰਮ ਹੈ ਉਹਨਾਂ ਦਾਨ ਬਗੈਨਦ ਨੇ ਉਹ ਜਿਹੜੇ ਉਹਨਾਂ ਨੂੰ ਧਾਰਮਿਕ ਬੰਦੇ ਨਹੀਂ ਮੰਨਦੇ ਨਾ ਵੀ ਪਾਕਾ ਹੀ ਧਾਰਮਿਕ ਹੈ ਨਹੀਂ ਉਹ ਪਰ ਜਿਹੜਾ ਕਾਇਦ ਵੀ ਤੁਸੀਂ ਧਾਰਮਿਕ ਉਹਨਾਂ ਨੇ ਗਾਵੇ ਦਾਨ ਵੇ ਤੋਕਰ ਕਰ ਇਰਾਕ ਜਾਨ ਇਮਾਨਦਾਰੀ ਮੁੱਢਲੀ ਇਮਾਨਤ ਹੋਰ ਉਹ ਕਹਿੰਦੇ ਕੀ ਦਾਨ ਤੁਸੀਂ ਬਾ ਐਨੇ ਕਹਿੰਦੇ ਦਾਨ ਦਾ ਤੁਸੀਂ ਇਹਨਾਂ ਨੂੰ ਸੰਕਾ ਦਾ ਪਬਲਿਕਾ ਝੂਰੋਲ ਕੇ ਦਾੰਦ ਵਿੱਚ ਉਠਾਉਂਦਾ ਕਿ ਦਾੰਦ ਸੱਚਾ ਹੁੰਦਾ ਫਿਰ ਜਦੋਂ ਵੀ ਲੜਾਈ ਹੋਈ ਹੈ ਦਾੰਦ ਬਾਅਦ ਦੇਵਤੇ ਨਹੀਂ ਇਹਨਾਂ ਦੇ ਇਤਿਹਾਸ ਹੈ ਇਹਨਾਂ ਦਾ ਇਹ ਨੇ ਜਦ ਵੀ ਦੇਵਤਿਆਂ ਦਾ ਇਹਨਾਂ ਦਾ ਖੰਡਾ ਖੜਕਿਆ ਰੱਖਦਾ ਦੇਵਤੇ ਹੀ ਭਜਦੇ ਦਿਖਾਏ ਫੇ ਜਾ ਕੇ ਉਹ ਪਤਾ ਕਿਥੇ ਕੇ ਮਤਲਬ ਅਪਰ ਭਿਆਨੀ ਨੂੰ ਫੜਿਆ ਜਾ ਕੇ ਜਨਵਾੰਦੂ ਚੰਡੀ ਚੰਡੀ ਕੋਲ ਜਾਂਦੇ ਰਹਿ ਚੰਡੀ ਨੂੰ ਫੇਰ ਧਿਆਇਆ ਜਾ ਕੇ ਫੇ ਕੋਈ ਉਹ ਆਇਆ ਜੀ ਜਿਹੜਾ ਕਿ ਉਹ ਕਹਿੰਦੇ ਸਬਦ ਕਰੋ ਰੱਬ ਹੈਗਾ ਕੋਈ ਕਹਿੰਦੇ ਸਬਦ ਦੇ ਨਾ ਦੇ ਕੋਈ ਨਹੀਂ ਇਹਦਾ ਹੋਰੇ ਕੋ ਬਣਾ ਹੀ ਬੈਠੇ ਫਿਰ ਇਹ ਆ ਨੇ ਉਹ ਕਹਿੰਦਾ ਜਨਾ ਜਾਓ ਉਸੇ ਤੱਕ ਕਰਕੇ ਆਓ ਫੇ ਪੁੱਛ ਕੇ ਆਓ ਭੋਜ ਗਏ ਤੇ ਭੋਜ ਲੈਣਾ ਜਾਂਦੇ ਜੰਗਲਾਂ ਚ ਬੱਗਾ ਲੈ ਆਪਣਾ ਇਹ ਕਹਿੰਦੇ ਸਾਡੇ ਕੋਲ ਤਾਂ ਨਹੀਂ ਜੰਗਲਾਂ ਚੋਂ ਖਾਦੇ ਉਹਨਾਂ ਨੂੰ ਬੱਗਾ ਲੈ ਆਓ ਤਾਂ ਫਿਰ ਜਾ ਕੇ ਲੈ ਕੇ ਆਉਂਦੇ ਫਿਰ ਉਹ ਜਾਂ ਸਾਫਤ ਹੋ ਜਾਂਦਾ ਉਹਨਾਂ ਨੂੰ ਫਿਰ ਉਹ ਬੁੱਝ ਜਾਂਦੇ ਕਹਿੰਦੇ ਇਹ ਤਾਂ ਗੱਲ ਠੀਕ ਹੈ ਉਹ ਸਾਰੇ ਮੰਨ ਜਾਂਦੇ ਨੇ ਇਹ ਚੁੱਪ ਕਰ ਗਈ ਇਹਨਾਂ ਇਹਨਾਂ ਵਿੱਚ ਅੰਦਰੋਂ ਤਾਂ ਚਾਹੇ ਸਾਫਤ ਹੋਵੇ ਜਾਂ ਨਾ ਹੋਵੇ ਦੇਵਤਿਆਂ ਦੀ ਫਰੋਂ ਚੁੱਪਸੰਧੀ ਹੋ ਜਾਂਦੀ ਹੈ ਬਿਸ਼ਰਮਕੀ ਤੇ ਚੁੱਪ ਹੋ ਜਾਂਦੀ ਹੈ ਅੰਦਰੋਂ ਨੇ ਕੋਈ ਇਹ ਇਹਨਾਂ ਨੂੰ ਘੱਟੇ ਹੋਰ ਦਾ ਨਫਜ਼ ਦੇ ਅੰਦਰੋਂ ਦੀ ਬਗਾਲਾ ਦਾ ਨਹੀਂ ਬਦਲੇ ਪਰ ਵਿਰੋਧ ਨਹੀਂ ਕਰਦੇ ਇਸ ਕਰਕੇ ਨਾ ਇਹਨਾਂ ਨੂੰ ਕੋਈ ਕੁਝ ਕਹਿਦਾ ਜੇ ਤਰਕ ਕਰ ਪੁੱਛਣਗੇ ਤਾਂ ਇਹ ਦੱਸੂ ਜੇ ਜੇ ਬਣਾਵੇ ਨਹੀਂ ਅੰਦਰ ਉਹ ਹੀ ਜਾਣਾ ਇਸ ਕਰਕੇ ਛੇਤੀਓ ਹੀ ਖਰਾਬ ਫਿਰ ਕਰ ਦਿੰਦੇ ਜੇ ਰੋਗਾਂ ਅੰਤਿਛੇ ਨੂੰ ਛੇਤੀ ਉਹਰਾਵ ਕਰ ਦਿੰਦੇ। ਕਿ ਦੋਤੇ ਬੈਠੇ ਰਹਿੰਦੇ। ਉਹ ਲੱਗਦਾ ਨਹੀਂ ਕਿ ਅਲਗਦਾਂ ਨਹੀਂ ਰੋਚ ਆਏ ਨਹੀਂ। ਅੰਦਰੋਂ ਰੋਚ ਹੁੰਦੇ ਨੇ। ਹੁੰਦਾ ਨੇ ਉੱਤੋਂ ਉੱਤੋਂ ਫੈਲ ਹੁੰਦੇ। ਛੇਤੀ ਕਰ ਦਿੰਦੇ। ਉਹ ਦਰਵਾਜ਼ੇ ਚ ਫੋੜਾ। ਇੱਕ ਉਹ ਦੇਵਦਾਨ ਨੂੰ ਇੰਦਰ ਕੋੜ ਦੇਵਦਾਨ ਬਿੱਦਰ ਬੜਾ ਗੰਭੀਰ ਮਸਲਾ ਆ ਲਿਆ ਹੈ ਇਹਨਰ ਸੋਚਦਾ ਬਹੁਤ ਲੱਗਦਾ ਆਹ ਲੱਗਦਾ ਇਹ ਠੀਕ ਹੈ ਜੀ ਇਹ ਇਹਨਾਂ ਪੰਕਤੀਓਂ ਦੱਸ ਦੇ ਵਿੱਚ ਕਿਵੇਂ ਸਾਰਾ ਕਰੀਏ ਤੇ ਚਲੇ ਕੇ ਪੌਣ ਪਾੜੀ ਦੇ ਆ ਕੇ ਅੜ ਗਈ ਗੱਲ ਕਿਥੋਂ ਲੱਗਿਆ ਉਹਨੇ ਪੌਣ ਪਾੜੀ ਰੋਪੋਂ ਪਾਣੀ ਦਾ ਬਹੁਤੀ ਕਿਸਮ ਦੀ ਮੰਦ ਲਾਂਗੇ ਪਰ ਉੱਥੇ ਚੇਤਨਿਕਥਿਆ ਰਚਨਾ ਜਿਤੋਂ ਪਾਣੀ ਦੀ ਲਾ ਸਕਦੇ ਅਸੀਂ ਬਾਲ ਸਕਦੇ ਤੇ ਰਚਿਆ ਵਰਗੀ ਹੈ ਜਿੱਦਾਂ ਜਦ ਚੇਤਨ ਨਹੀਂ ਹੈ ਬੱਚੇ ਉਹ ਰਚਨਾ ਨੇ ਕੀ ਕਰਦੇ ਰਚਨਾ ਉਹ ਬੱਚੇ ਜੜਿਆ ਸਾਰਾ ਹਾਂ ਰਚਨ ਹਰਾ ਵੀ ਤਾਂ ਉੱਥੇ ਹੋਵੇ ਰਜਣ ਆ ਰਹਾ ਹਾਂ ਪਰਮਦੇ ਅੰਦੇ ਚ ਤੇ ਇੱਥੇ ਜੀਵਨ ਸਬਤ ਹੋ ਗਿਆ ਹੋ ਗਿਆ ਨਾ ਹੋ ਗਿਆ ਉਹ ਇਹ ਆਂਡਾ ਦੋਬਰ ਜਾ ਗਿਆ ਆਂਡਾ ਵੱਡਾ ਬੱਚਾ ਛੋਟਾ ਉਹ ਆਂਡਾ ਕਿਲਾ ਬਾਹਰ ਆਇਆ ਸਰੀਰ ਤਾਂ ਐਡਾ ਹੋ ਗਿਆ ਆਂਡਾ ਦਾ ਵੀ ਉਡਾ ਕੇ ਜਾਈਦਾ ਤਾਂ ਉਹ ਛੋਟਾ ਜਾ ਵੱਡਾ ਹੋ ਗਿਆ ਪਰ ਤੂੰ ਆਂਡਾ ਉਡਾਈਆ ਸਰੀਰ ਭਾਵੇਂ ਵਧੀ ਜਾਵੇ ਸਰੀਰ ਦੀਆਂ ਨਾਲ ਬਦਲ ਮਾਨਸਿਕ ਤੇ ਉੱਡ ਕੇ ਕਿੱਥੇ ਬਾਹਰ ਕੇ ਬਿਨਾਂ ਦੂਰ ਦੂਰ ਕਿ ਮੈਂ ਚਲਾ ਜਾਂਦਾ ਜਾਂਦਾ ਵੱਡਾ ਅੱਗੇ ਅੱਗੇ ਜਾ ਆਹ ਆਹ ਇਹ ਅੰਦਰੋਂ ਪਰ ਅੰਦਰੋਂ ਵੀ ਉੱਠਦਾ ਤੇ ਨਹੀਂ ਉੜ ਸਕਦਾ ਹਾਂ ਪਰ ਜਿੱਤੇ ਤਾਂ ਉੜਦਾ ਅੰਤ ਉੜਦਾ ਗਿਆ ਸਰੀਰ ਦੇ ਵਿੱਚ ਅੜਾਰੀ ਲੋਬੀ ਹੋਣਾ ਕਿਉਂ ਤੇ ਲੰਬੀ ਨਜ਼ਰ ਨਿਹਾਲੀ ਹੈ ਲੰਬੀ ਹੋ ਗਈ ਏ ਡਾਰੀ ਕਿਤੇ ਕੁੱਕੜ ਦੀ ਡਾਰੀ ਆ ਕਿਤੇ ਬਈ ਹੰਸ ਦੀ ਅੜਾਰੀ ਹੋਣੀ ਏ ਕੋਈ ਅੰ데 ਨਹੀਂ ਬਦਲਣਾ ਰੋਜ਼ ਉਹ ਵੱਧ ਗਈ ਫੋਟਣਾ ਬੋਲ ਬੋਲਾ ਵਧੀ ਜਣੀ ਸ਼ਕਤੀ ਵਧੀ ਜਾਣੀ ਆ ਅੱਡ ਦਰ ਬਾਦਕੇ ਫੁੱਟਣਾ ਹਾਂ ਨਾ ਪੂਰਾ ਜੱਟ ਟਾਇਰ ਹੋ ਜਾਣਾ ਉਦੋਂ ਕਹਾ ਆਪ ਹੈ ਦੀ ਪੜਾਕਾ ਪੈ ਜਾਣਾ ਜਾ ਕੇ ਉੱਥੇ ਅੱਥੋੜਾ ਜਾ ਹੋ ਗਈ ਪੈ ਜਾਣਾ ਪੜਾਕਾ ਜਿੱਥੇ ਜਾ ਕੇ ਟਾਇਰ ਹੋ ਨਾ ਉੱਥੇ ਜੇ ਉਹ ਉੱਥੇ ਟੁੱਟ ਚਲਾ ਗਿਆ ਲਾਗਿਆ ਨਾਲ ਫਿਰ ਵੀ ਪੜਾਕਾ ਪੈ ਜਾ ਉਰੇ ਫੁੱਟ ਜਾਂਦਾ ਬੁੱਲਬਲਾ ਫੁੱਟਾ ਜਾਈ ਸਾ ਸੁਭੇ ਕੇ ਘਾੜਦਾ ਹੀ ਫੁੱਟ ਜਾਂਦਾ ਬਸ ਉਹ ਨਾਲ ਹੀ ਦਿਖਣੇ ਲੱਗ ਜਾਂਦਾ ਫਿਰ ਤੇਰੇ ਆਪੇ ਕਰਨਾ ਜਾਂ ਦਿਖਣ ਲੱਗੇ ਆਪਾਂ ਕੋ ਦਿੰਦਵਾ ਕਰਨਾ ਫਿਰ ਉੱਥੇ ਪ੍ਰੋਬਲਮ ਆਪੇ ਫੁੱਟ ਜਾਣਾ ਉਸੇ ਭਰਵਾਪੇ ਨਿਕਲ ਗਿਆ ਵੀ ਤਾਂ ਸਮ ਤੇ ਫਿਰ ਜਿਹੜੇ ਆਪਾਂ ਇਸ ਚੀਜ਼ ਨੂੰ ਟੋੜ ਦਿਆਂ ਹੈ ਕਿ ਨਹੀਂ ਹੈ ਹੈ ਕਿ ਨਹੀਂ ਹੈ ਕਿ ਨਹੀਂ ਹੈ ਉਹ ਜੋ ਉਹ ਸਭ ਲੱਛਣ ਸਾਹਮਣੇ ਆ ਕੇ ਖੜਾ ਜੇ ਨਾਲ ਦਾ ਘਰ ਬਟਣੋਂ ਲੋ ਪਕੜਾ ਹੋਈ ਜਾਣਾ ਉਹ ਉਹਨੇ ਪਕੜਾ ਤਾਂ ਹੋਈ ਜਾਣਾ ਕਮਜ਼ੋਰ ਹੋਈ ਜਾਣਾ ਉਹਨੇ ਕਮਜ਼ੋਰ ਹੋ ਜਾਂਦਾ ਫੇਰ ਇੰਨਾ ਕਮਜ਼ੋਰ ਹੋ ਜਾਣਾ ਥੋੜੀ ਜੀ ਜੋਰ ਤਾਕਤ ਘੱਟ ਲੱਗਣੀ ਹਵਾ ਜਿਆਦਾ ਜਾਣੀ ਉਹਨੂੰ ਕਹਿੰਦੇ ਪਰਬਦੀ ਜੇ ਇੰਦਰ ਸ਼ਕਤੀ ਜਿਆਦਾ ਹੋਵੇ ਫੋਰਸ ਜਿਆਦਾ ਹੋਵੇ ਉਦੋਂ ਉਹ ਜਿਸ ਤਰ੍ਹਾਂ ਸੋਦੀ ਹੋ ਜੇ ਫੇਰ ਪਰ ਪ੍ਰਤੀਰ ਦੀ ਗੱਡੀ ਉਦੋਂ ਤੱਕ ਜੋਰ ਨਾਲ ਰੁਕ ਮਾਰੇ ਤਾਂ ਮੜਾ ਗਿਆਨ ਉੱਧਰ ਜਾਵੇ ਪ੍ਰੈਸ ਕਰੇ ਤੇ ਉਹ ਗਿਆਨ ਹੋਵੇ ਤਾਂ ਉੱਧਰ ਜਾਵੇ ਪ्योर ਹੋਵੇ ਤਾਂ ਉੱਧਰ ਜਾਵੇ ਬੋਟਾ ਸੁਈ ਦੇ ਜਿਨਕ ਦਾ ਬਰੀਦ ਹੈ ਰਾਈ ਦਾ ਸਮੇ ਨਾ ਹਾਂਜੀ ਕਈ ਕੋਟ ਦੇਵਦਾਨਾ ਆ ਸੁਈ ਸੀ ਸਾਰਾ ਕੁਝ ਸੂਈ ਚੜਾ ਲਈ ਜੀ ਸਭ ਦਿੱਤੀ ਆਈ ਹੋਈ ਹੈ ਜੀ ਦੇ ਵਿੱਚ ਜੀ ਹੁੰਦਾ ਬ੍ਰੇਕ ਹੁੰਦਾ ਤਾਂ ਜੈਕਟ ਹੋ ਜਾਂਦਾ ਜਿਉਂ ਨਾ ਬ੍ਰੇਕੀ ਨਾਲ ਸਮਝੋ ਤੇ ਜੈਕਟ ਹੋਈ ਜਾਂਦਾ ਸਮਝਾਈ ਜਾਂਦੀ ਉਹ ਗੱਲ ਕੀ ਅਚਾਨਕ ਹੋਈ ਜਾਂਦਾ ਹਾਂ ਜੀ ਕਈ ਕੋਟ ਦੇਵ ਦਾਨਵ ਇੰਦਰ ਸੰਸਤਨ ਕਈ ਕੋਟ ਦੇਵ ਇੰਦਰ ਕਈ ਕੋਟ ਦੇਵਦਾਨ ਇਧਰ ਸਿਰ ਸਿਰ ਛਤਰ ਪਰ ਅਜੇ ਇੱਕ ਰੀਲ ਦਾ ਇਧਰ ਸਾਰੇ ਇਧਰੇ ਜਿਹਾ ਜੀ ਇਹ ਵੀ ਕਰੋੜ ਹੈ ਇਹ ਇਧਰ ਇਕ ਲੰਘ ਰਿਹਾ ਜੀ ਹਾਂ ਜੀ ਸકલ ਸਮਗਰੀ ਆਪਣੇ ਸੂਤਰ ਪਰ ਜਿੱਤੀ ਵੀ ਇਹ ਸਾਰੀ ਵਰਤਾ ਸਮਗਰੀ ਹੈ ਚਾਹੇ ਉਹ ਜਾਲ ਹੈ ਜਾਂ ਜੇਤਨ ਹੁਣ ਸਮਗਰੀ ਮੋੜ ਜਣਾ ਲਈਆਂ ਨਮੋਤਰੀ ਕਰ ਲਈਆ ਸਮਗਰੀ ਆਪਣੇ ਸੂਤਰੇ ਧਾਰੇ ਹੁਣ ਸਮਗਰੀ ਲੱਭਦਾ ਹੈ ਸਮਗਰ ਟੋਟਲ ਜਿਹੜੀ ਜੜ ਕੀ ਚੇਸਨ ਆਪਣੇ ਹੁਕਮ ਚ ਵੱਡੀ ਹੁੰਦੀ ਹੈ ਆਪਣੇ ਸੂਤਰ ਹੁਕਮ ਹੈ ਆਪਣੇ ਸੂਤਰੇ ਹੋਰ ਚ ਪਾਈ ਹੋਈ ਅਪਰੋਜ ਹੋ ਜਾਂਦਾ ਔਰ ਨੱਥ ਪਾਈ ਹੋ ਜਾਂ ਆਪਣੀ ਆਪਣੇ ਹੱਥ ਭਾ ਕੇ ਆਪਣਾ ਵਸ ਕੀਤਾ ਹੋਇਆ ਆਪਣਾ ਜੁੱਤਰ ਧਾਰੀ ਜੁੱਤਰ ਧਾਰੀ ਜੀ ਸੇਵਾ ਕਰਦੇ ਹਾਂ ਜੁੱਤਰੀ ਧਾਰੇ ਜਿਹੜਾ ਜੇਤਨ ਹੁਕਮ ਲਾ ਸਕਦੇ ਐਵੇਂ ਚੱਲ ਨੇ ਉਹ ਹੁਕਮ ਦੇ ਵਿੱਚ ਸਾਰੇ ਸੰਗਰੀ ਉਹਤੇ ਬੋਲ ਆ ਫਿਰ ਵਰਤੇ ਵਿੱਚ ਪਵਨ ਸਰ ਵਾਹ ਸਰ ਵਾਓ ਵਾਓ ਉਹ ਤੇ ਪਵਨ ਬਹੁਤ ਵਾਰੀ ਨਾ ਖਲੇ ਲੈਣੇ ਅਸੀਂ ਮਾਨ ਨਾਲ ਨਹੀਂ ਲੈਣਾ ਉੱਥੇ ਪਵਨ ਹੱਦ ਬਹੁ ਪਵਨ ਆਰ ਬਹੁ ਨਾਲ ਬਹੁ ਹਵਾ ਨਾਲ ਦੋਏ ਭੈਚੂ ਉਹ ਪਵਨ ਨਾਲੇ ਰਹਿਣੇ ਨਾ ਉਹ ਤੇ ਵਾਲੇ ਵੀ ਤਾਂ ਬੱਚੇ ਤਾਂ ਆਉਣਗੇ ਜੇ ਪਵਨ ਨਾਲ ਬਹੁ ਇਕੱਠੇ ਕਰਾਂਗੇ ਇਹ ਤੇਰੇ ਤੇ ਆਲੇ ਨਿਕਲ ਜਾਣਗੇ ਫਿਰ ਵਿਚੋਂ ਬਵਨੋ ਰੂਪ ਬਵਨ ਦਾ ਰੂਪ ਉਹ ਹੈ ਜੇ ਤਰ ਬੋ ਹੋਇਆ ਉਹਨੂੰ ਬੋ ਕਹਿੰਦਾ ਬਵਨ ਰੂਪ ਕਿਹਾ ਉਹ ਬਵਨ ਵਰਗਾ ਰੂਪ ਜਿਵੇਂ ਹਵਾ ਦੇ ਕੋਲ ਜਿਵੇਂ ਪਬਲੂ ਜਿਵੇਂ ਹਵਾ ਦੇ ਵਿੱਚ ਆਕਾਸ਼ ਹਵਾ ਕੁੰਡੀ ਹੈ ਐ ਭਾਈ ਜਿਓ ਕੋ ਬਾਂਗੇ ਆਕਾਸ਼ ਅਡੋਲ ਅਵਸਥਾ ਦੀ ਪ੍ਰਾਪਤ ਹੁੰਦੀ ਰੋਲ ਉਸ ਅਧਿਪ੍ਰਾਪਤ ਹੈ ਹਵਾ ਦੇ ਕੁੰਦੀਆ ਦੇ ਨਾਲ ਅਸੀਂ ਕੋ ਪਾਉਂਦੇ ਇਹ ਜਿਹੜੀ ਸਾਹ ਲੈਣ ਵਾਲੀ ਕਿਰਿਆ ਉਹ ਹਵਾ ਹਰ ਵਕਤ ਹਵਾ ਨਾਲ ਜੁੜਿਆ ਹੋਇਆ ਉਹ ਸਾਡੀ ਨਾ ਉਹਦੀ ਪੌਣ ਉਹਦੀ ਤੇ ਪੌਣ ਜਦੋਂ ਹੀ ਸ਼ਕਤੀ ਕੰਮ ਕਰਦੀ ਐਂ ਕਹਿ ਲੋ ਪਾਣੀ ਜਦੋਂ ਹੀ ਸ਼ਕਤੀ ਕੰਮ ਕਰਦੀ ਹੈ ਜੀਵ ਦੀ ਪਾਣੀ ਦੇ ਬਿਤੇ ਖੂਨ ਖੂਨ ਚ ਪਾਣੀ ਹੈ ਹਵਾ ਚ ਉਹ ਜਾਂਦਾ ਹੈ ਇਹ ਗੰਦ ਪਾਉਂਦਾ ਹੈ ਪਾਣੀ ਦੇ ਵਿੱਚ ਇਹ ਹੈ ਨਾ ਜੀਵ ਇਹ ਗੰਦ ਪਾਉਂਦਾ ਹਵਾ ਚ ਹੀ ਸਾਹ ਲੈਂਦਾ ਸਰੀਰ ਦੇ ਵਿੱਚ ਆਵਾਜ਼ ਨਹੀਂ ਕਰਦੀ ਆਕਸੀਜਨ ਫਿਰ ਇਹ ਪਾਊਗਾ ਸਰੀਰ ਚ ਵੀ ਇਹ ਗੰਦ ਪਾਉਂਦਾ ਇਹਨਾਂ ਦੀ ਗੰਦ ਪੈ ਐਂ ਗਾ ਲੋ ਪਾਣੀ ਵਾਲੇ ਪਾਸੇ ਵੀ ਹੋਰ ਜ਼ੰਦਾ ਬਣਦਾ ਹਵਾ ਦਾ ਪਾਸਾ ਅਗੇ ਸਾਫ਼ ਕਰਦੇ ਸਮਗਰੀ ਜਿਹੜੀ ਲੱਭ ਜਾਇਆ ਉਹ ਛੱਡ ਜਾਣੀ ਛੱਡ ਜਾਣੀਆਂ ਉਹ ਦਾ ਵਜੜਾ ਹੈ ੱੱਲੇ ਜਾਣ ਵਾਸਤੇ ਹੈ ਪਰ ਸਮਗਰੀ ਦਾ ਵਜੜਾ ਟੋਟਲ ਟੋਟਲ ਸਮਗਰੀ ਦਾ ਜਿਹੜਾ ਲੱਭਦਾ ਹੈ ਸਮਗਰੀ ਅਸੀਂ ਜਦ ਚੇਤਨ ਨੂੰ ਕੀ ਸਕਦੇ ਹਾਂ ਜਿਹੜੀ ਸਮਗਰੀ ਲੱਭਦਾ ਹੈ ਸਿਰਫ ਆਪਣੇ ਸੂਤਰ ਧਾਰ ਹੈ ਉਹ ਵੀ ਠੀਕ ਹੈ ਪਰ ਕੀ ਚੇਤਨ ਸੂਤਰ ਦੇ ਵਿੱਚ ਨਹੀਂ ਹੈ ਚੇਤਨ ਵੀ ਇਹ ਦੁੱਤਰ ਸੀ ਚੇਤਨ ਤਾਂ ਖੁੱਲੇ ਨੇ ਸਵਾਲੇ ਖੜਾ ਹੋ ਗਿਆ ਤੇ ਕਦੀ ਸੁਗਰੀ ਹੋੜੇ ਉਹ ਦੁੱਤਰ ਸੀ ਇਹ ਤੇ ਚੇਤਨ ਜਿਹੜਾ ਹੈਗਾ ਉਹ ਤੇ ਬਾਹਰ ਐ ਫਿਰ ਮੇਰਾ ਕੀ ਜਦ ਚੇਤਨ ਸਾਰੇ ਉਹਦੇ ਸੁਤਰ ਦਾ ਨਹੀਂ ਹਾਂ ਸੁਗਰੀ ਦੋ ਚੀਜ਼ਾਂ ਚੇਤਨ ਵੀ ਹੈ ਜੜ ਵੀ ਅਸੀਂ ਟੋਟਲ ਜੜਰ ਨੂੰ ਵੀ ਹੁੰਦਾ ਸਰ ਜੀ ਜਿਹੜੀ ਛੱਡ ਜਾਣੀ ਹੈ ਸਮਗਰੀ ਉਹ ਹੋ ਚੀ ਗਈ ਹੈ ਉਝੜਾ ਉਹ ਜੀਵ ਵਾਸਤੇ ਛੱਡ ਆਈ ਹੈ ਹਾਂ ਉਹ ਉਹ ਵਾਹ ਜੀਵ ਦੀ ਜੀਵ ਵਾਸਤੇ ਸਮਗਰੀ ਹੈ ਜੀਵ ਦੀ ਸਮਗਰੀ ਉਹ ਜਿਹੜੀ ਪਰਮੇਸ਼ਰ ਦੀ ਸਮਗਰੀ ਉਹ ਖੇਤਮ ਵੀ ਦੇ ਵਿੱਚ ਜੀਵ ਕੋਲ ਨਹੀਂ ਤੇਰਾ ਉਹ ਤੇ ਜੀਵ ਨਹੀਂ ਤੇਰਾ ਉਹਦੀ ਜਿਹੜੀ ਸਮਗਰੀ ਹੈ ਜੀਵ ਪਿੰਡਾ ਫਿਰ ਇਹ ਆਪਣੇ ਸਮਗਰੀ ਪਿੰਡ-ਪਿੰਡ ਹੈ ਪਿੰਡਾਂ ਨਾਲ ਲੇਟੜਾ ਉਹਦੀ ਸਮਗਰੀ ਜੀਓ ਬਿਲਡ ਹੈ ਉਹਨੇ ਆਪਣੀ ਸਮਗਰੀ ਤਾਲੜ ਕੀਤੀ ਸਾਡੇ ਵਾਲੇ ਦੀ ਕੀਤੀ ਸਾਡੇ ਅੱਜ ਦਾ ਵਰਤ ਨਹੀਂ ਸਾਡੀ ਆਪਾਂ ਖੜਾ ਹੋ ਕੇ ਫੜੀ ਜੀਓ ਕੁੱਟਦੇ ਨਾ ਬਸਦੇ ਉਹ ਬਹੁਤ ਜਿਹੜੀ ਸੂਤਰਤਾ ਵਾਲੀ ਗੱਲ ਹੈ ਤਦੈ ਰਬੋਤ ਬੋਲਦਾ ਹੈ ਹੂੰ ਤਾਂ ਸਦਾ ਕਿਹਾ ਹੈ ਸਭਨਾਂ ਦਾਣ ਦਸ ਅਸ ਸਿਧਾਂਤ ਠਾਕਰ ਕਰਦਾ ਜਿਸ ਦੇਵੇਂ ਕਰਤਾ ਤੇਰੇ ਸਭ ਕੁਝ ਹੈ ਜਿਦਦੇ ਹੈ ਸੋਭਾ ਆਵੇ ਇਹ ਤਾਂ ਬਤਾ ਲੱਗੇ ਨਾ ਲਾ ਨਾਲ ਹੀ ਹੈ ਸਭ ਕੁਝ ਹਾਂ ਸਗਲ ਸਮਗਰੀ ਆਪਣੇ ਸੂਤਰ ਘਾਰੇ ਨਾਨਕ ਜਿਸ ਜਿਸ ਜਿਸ ਭਾਵੇ ਇਸ ਤੇ ਸਮਿਸ਼ਟਾਰੇ ਹਾਂ ਫਿਰ ਕਹਿਣਾ ਜਿਸ ਜਿਸ ਭਾਵੇ ਇਸ ਕਿਸਮਿਸਾਰੇ ਜਿਹਨੂੰ ਇਹ ਗੱਲ ਚੰਗੀ ਲੱਗਦੀ ਹੈ ਸਗਲ ਸਮਗਰੀ ਉਹਦੇ ਸੂਤਰ ਦੇ ਵਿੱਚੇ ਰਹੇ ਜਿਹਨੋ ਤਾਂ ਇਹ ਸ਼ਰਤ ਠੀਕ ਆ ਬੁੱਧੂਰ ਪਉਂਦੀ ਹੈ ਉਹਦੇ ਸੂਤਰ ਸੀ ਗਾਣਾ ਜੰਗਾਲਾ ਉਈ ਉਹਨਾਂ ਧਾਰੀ ਹੋਈਆ ਭਾਈ ਅਬੁਲ ਸ਼ਾਂਤੀਆ ਅਸੀਂ ਤਾਂ ਆਪਣੇ ਆਰਾਮ ਕਰਦੇ ਬੈਠੇ ਬਿਠਾਣ ਨੂੰ ਸੂਰ ਚੜਦਾ ਕਦੇ ਚਿੰਤਾ ਨਹੀਂ ਕਰਦਾ ਕਿ ਜਾਣੇ ਕਿ ਨਹੀਂ ਚੜਦਾ ਤੇ ਛਪਣਾ ਨਹੀਂ ਛਪਣਾ ਨਹੀਂ ਪੈਣਾ ਕਰੇ ਨਹੀਂ ਪੈਣਾ ਇਹਦਾ ਕੋਈ ਚਿੰਤਾ ਨਹੀਂ ਜਿਹਦੇ ਚੜ ਗਿਆ ਤਾਂ ਦੁਆ ਰਾਤ ਬੈਣੀਆਂ ਕਰ ਪੈਣੀਆਂ ਲੇਟ ਦਾ ਵੀ ਪੈਣੀ ਤੇ ਸਭ ਉਹਨੂੰ ਫਿਕਰ ਉਹਦੇ ਹੂਟਰ ਧਾਰੀ ਹੈ ਸਾਰੀ ਪਰ ਜਿਹਨੂੰ ਇਹ ਗੱਲ ਚੰਗੀ ਲੱਗਦੀ ਹੈ ਪੰਜ ਜਹਨ ਜਿਸ ਜਿਸ ਹੈ ਇਸ ਹੈ ਹੀ ਕੋਈ ਪਰ ਜਿਹਨੂੰ ਸੇਵ ਕੋ ਆਉਂਦੀ ਹੈ ਸਾਨੂੰ ਕਿਉਂ ਨਹੀਂ ਭਉਂਦੀ ਡਰੂਗਾ ਉਹ ਜਿਹਨੂੰ ਭਉਂਦੀ ਉਹਦੀ ਅਗਿਆਨਤਾ ਦੂਰ ਹੋ ਉਹਦਾ ਭਰਮ ਕਟਿਆ ਜਾਊ ਜਿਹਨੂੰ ਭਾਜੂ ਉਹਦਾ ਭਾਨ ਬਿਠਾ ਜੂ ਤੇ ਬਾਕੀ ਵਾ ਇਹ ਕਹਤਾ ਤੇ ਫਿਰ ਦਸਾਰੇ ਬਾਕੀ ਚਾਰਤ ਮੱਕੀ ਆਪੇ ਸਮਝ ਲੈਣ ਬੰਗਿਆ ਉਹ ਮੱਕੀ ਆਪੇ ਸਮਝ ਲੋ ਚੱਲਣਗੇ ਉਹ ਹੀ ਜਿਹੜੇ ਜਿਹਨਾਂ ਉਹ ਸਰਦਾਰ ਬੂ ਬੂਦਰਾ ਭੇਜਿਆ ਦੂਰ ਜਾਊਗਾ ਰਾਜਾ ਰੇ ਖਾਲਸਾ ਉਹ ਆਪਣੇ ਆਪਣਾ ਪੜਿਆ ਪਜਾਲ ਲਵੇ ਜੋ ਉਹਨੇ ਪੜਿਆ ਕਿਤੇ ਹੋਰ ਅਸੀਂ ਤਾਂ ਪੜਿਆ ਸੁਤੋਕਰ ਆਪਣੇ ਸੁਤਤਾਰੇ ਅਸੀਂ ਤਸਾਂ ਆਏ ਛੱਤੇ ਤੇ ਪਹੁੰਚਿਆ ਗੁਰਬਾਣੀ ਪੜ ਉਹਨਾਂ ਨੇ ਜੋ ਪੜਿਆ ਉਹ ਆਪਣੇ ਅਨੁਸਾਰ ਨਾ ਆਪਣਾ ਪੜਿਆ ਆਪਣਾ ਪੜਿਆ ਵਿਚਾਰ ਲੈਣਾ ਉਹ ਆਪਣੇ ਪੜਿਆ ਜਿਹਨੋਂ ਨਾ ਕਰਵਾ ਦੂ ਇਹ ਲਿਆ ਅਕਾਲ ਤੱਕ ਦਾ ਬੰਦ ਲਿਆ ਅਕਾਲ ਤੱਕ ਵੀ ਦਾ ਉੱਥੇ ਉਹੀ ਕਰਵਾ ਦੇ ਵੀ ਬਿਜਲੀ ਚੱਲ ਨਹੀਂ ਦੂਈ ਦਾ ਦਰਵਾਜ਼ਾ ਆਵੇ ਚੱਲੂ ਇਹ ਗਿਆਨ ਚਾਹਿਆ ਕਰਤ ਨਹੀਂ ਦਰਵਾਜ਼ਾ ਜਿਕਰ ਹੋ ਇਹ ਪੱਕਾ ਨਹੀਂ ਉਹਨੇ ਤਾਂ ਅਕਾਲ ਤੱਕ ਕਿ ਹੋ ਜਾਓ ਉਸ ਤੇ ਵੀ ਕਰਵਾ ਰੋਗੇ ਜੋ ਤਲਵਾਰ ਉੱਥੇ ਹੈ ਚਲਾਈ ਜਾਣਾ ਕੋਈ ਗਲਤੀ ਨਹੀਂ ਕੀਤਾ ਉਹ ਤੇ ਹੀ ਦੀਦੀ ਜੀ ਕਹਿੰਦੇ ਨੇ ਗੱਲ ਕਰਦੇ ਆ ਕਰੋ ਲੈ ਕੇ ਨਾ ਜਾਓ ਜਾ ਉੱਥੇ ਲੈ ਕੇ ਨਾ ਜਾਓ ਉੱਥੇ ਲੈ ਕੇ ਜਾਇਓ ਉਧਰ ਫਟੇਲਾ ਜਾਓ ਕੋਈ ਗੱਲ ਨਹੀਂ ਕਈ ਕੋਟ ਰਾਜਸਵਾਰ ਭਾਈ ਜਿਹੜੀ ਤੁਸੀਂ ਤਲਵਾਰ ਬੁੰਦੀ ਹੈ ਜਿੱਤੇ ਦੋਏ ਲੋਹੇ ਨਹੀਂ ਆ ਮਾਨਿਆ ਨਾ ਤੂੰ ਹੀ ਹੈ ਉਹ ਨਹੀਂ ਤੁਹਾਡੇ ਕੋਲ ਇਹ ਚੱਲਣੀਆਂ ਜਿਹੜੀਆਂ ਕੋਲ ਤੁਸੀਂ ਮੁੱਕਿਆ ਸਤਿਗੁਰੂ ਤੇ ਉਹਦੇ ਦਾ ਤੱਬ ਉਹਦੇ ਦਾ ਫਿਰ ਝਗੜੇ ਵਾਲੀ ਜਿਹੜੀ ਗੱਲ ਹੈ ਸੋਚੋ ਜੀ ਜੈ ਜੀ ਸੋਚੋ ਜੀ ਜੈ ਜੀ ਆਪਾਂ ਨੂੰ ਲੱਭਾ ਨੂੰ ਗਿਆ ਨੇ ਦੇਖਾ ਫਸਟੀ ਦਾ ਨੋਟਿਸ ਪੂਰਨ ਆਉਂਦਾ